ਗਰੁੜ ਚੜੇ ਗੋਬਿੰਦ ਆਇਲਾ کافی ਦਿਨ ਪਹਿਲਾਂ ਪ੍ਰੋਫੈਸਰ ਇੰਦਰ ਸਿੰਘ ਕਗਾ ਇੰਟਰਨੈਸ਼ਨਲ ਮਿਸ਼ਨਰੀ ਅਤੇ ਪ੍ਰੋਫੈਸਰ ਸੁਖਵਿੰਦਰ ਸਿੰਘ ਮਝੈਲ ਦਾ ਲਿਖਿਆ ਹੋਇਆ 28 ਪੰਨਿਆਂ ਦਾ ਕਿਤਾਬ ਚਾ ਗਰੁੜ ਚੜੇ ਗੋਬਿੰਦ ਆਇਲਾ ਪੜਨ ਨੂੰ ਮਿਲਿਆ ਇਸ ਕਿਤਾਬ ਜਿਹਦੇ ਪਹਿਲੇ 11 ਪੰਨਿਆਂ ਵਿੱਚ ਇਹਨਾਂ ਨੇ ਬ੍ਰਾਹਮਣ ਦੇ ਕਿਰਦਾਰ ਜੀਵਨ ਸ਼ੈਲੀ ਅਤੇ ਬ੍ਰਾਹਮਣੀ ਸਮਾਜ ਦੇ ਸਿੱਖ ਜਗਤ ਨਾਲ ਸਬੰਧਾਂ ਨੂੰ ਹੋਰ ਪ੍ਰਗਟ ਕੀਤਾ ਹੈ इस ਤੋਂ ਅੱਗੇ ਭਗਤ ਨਾਮਦੇਵ ਜੀ ਦੇ ਜੀਵਨ ਦੀ ਘਟਨਾ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1166 ਤੇ ਦਰਜ ਹੈ ਉਸ ਦੇ ਅਰਥ ਲੇ ਕੇ ਆਪਣੀ ਵਿਚਾਰਧਾਰਾ ਪ੍ਰਗਟ ਕੀਤੀ ਹੈ 13 ਦਸੰਬਰ 2007 ਨੂੰ ਭਾਸ਼ਾ ਉਪਾਗਵਚੇ ਪੁਸਤਕ ਮੇਲਾ ਦੇਖਣ ਗਏ ਮੇਰੀ ਮੁਲਾਕਾਤ ਕੱਗਾ ਜੀ ਨਾਲ ਹੋ ਗਈ ਅਤੇ ਕੱਗਾ ਜੀ ਨੇ ਗੁਰਮਤਿ ਸਿਧਾਂਤ ਤੇ ਆਪਣੀ ਸੋਚ ਅਨੁਸਾਰ ਕਾਫੀ ਚਰਚਾ ਕੀਤੀ ਕੁਦਰਤੀ ਗਰੁੜ ਚੜੇ ਆਇਲਾ ਦੇ ਸਰਲੇਖੇਟ ਪਿਆ ਸੀ ਇਸ ਤੇ ਵੀ ਵਿਚਾਰ ਚਰਚਾ ਹੋਈ ਅਸੀਂ ਇਸ ਲੇਖ ਵਿੱਚ ਕੱਗਾ ਤੇ ਉਸਦੇ ਸਾਥੀ ਵੱਲੋਂ ਗੁਰਬਾਣੀ ਦੇ ਸ਼ਬਦਾਂ ਦੇ ਕੀਤੇ ਅਰਥਾਂ ਦੇ ਵਿਸ਼ਲੇਸ਼ਣ ਕਰਕੇ ਅਤੇ ਕੱਗਾ ਜੀ ਨਾਲ ਜੋ ਜ਼ੁਬਾਨੀ ਗੱਲਬਾਤ ਹੋਈ ਦੱਸਾਂਗੇ ਤਾਂ ਜੋ ਪਾਠਕਾਂ ਇਹਨਾਂ ਦੀ ਵਿਚਾਰਤਾ ਦਾ ਮਾਨਸਿਕਤਾ ਦੀ ਸਹੀ ਜਾਣਕਾਰੀ ਮਿਲ ਜਾਵੇ ਅਸੀਂ ਇਸ ਲੇਖ ਵਿੱਚ ਕੱਗਾ ਤੇ ਉਸਦੇ ਸਾਥੀ ਦੇ ਕੀਤੇ ਸ਼ਬਦ ਦਾ ਅਰਥ ਹੀ ਲਿਖ ਰਹੇ ਹਾਂ ਅਤੇ ਨਾਲ ਨਾਲ ਅਸੀਂ ਆਪਣੇ ਵੱਲੋਂ ਟਿੱਪਣੀਆਂ ਦੇ ਰਹੇ ਹਾਂ ਦਾਸ ਦੀਆਂ ਟਿੱਪਣੀਆਂ ਟੇਢੇ ਅੱਖਰਾਂ ਵਿੱਚ ਹਨ ਭਗਤ ਨਾਮਦੇਵ ਜੀ ਦੇ ਉਚਾਰੇ ਇਸ ਸ਼ਬਦ ਦਾ ਪਿਛੋਕੜ ਜੋ ਵਿਦਤ ਹੈ ਉਹ ਲੇਖਕਾਂ ਨੇ ਲੇਖਕਾਂ ਨੇ ਜਾਣਬੁੱਝ ਕੇ ਨਹੀਂ ਦਿੱਤਾ ਭੂਮਿਕਾ ਵਿੱਚ ਆਪਣੀ ਮਨਮਰਜ਼ੀ ਦਾ ਰੰਗ ਭਰ ਕੇ ਅੱਗੇ ਅਰਥ ਕੀਤੇ ਹਨ ਸਹੀ ਭੂਮਿਕਾ ਇਸ ਪ੍ਰਕਾਰ ਹੈ ਭਗਤ ਨਾਮਦੇਵ ਜੀ ਆਪਣੇ ਪਿੰਡ ਜੋ ਮਹਾਰਾਸ਼ਟਰ ਵਿੱਚ ਹੈ ਤੋਂ ਸਫ਼ਰ ਕਰਦੇ ਜਾਂ ਦਿੱਲੀ ਪਹੁੰਚੇ ਤਾਂ ਇੱਕ ਦਿਨ ਪ੍ਰਭੂ ਭਗਤੀ ਵਿੱਚ ਲੀਨ ਬੈਠੇ ਸਨ ਇੱਕ ਇਸਤਰੀ ਨੇ ਭਗਤ ਜੀ ਦੀ ਆਵਾਜ਼ ਤੋਂ ਪ੍ਰਭਾਵਿਤ ਹੋ ਕੇ ਸੰਤ ਜਾਣ ਕੇ ਮੱਥਾ ਟੇਕਿਆ ਸੁਭਾਵਕ ਹੀ ਨਾਮਦੇਵ ਜੀ ਦੇ ਮੂੰਹੋਂ ਨਿਕਲਿਆ ਸੁਹਾਗਵਤੀ ਹੋ ਪਰ ਉਸ ਦੇ ਘਰ ਵਾਲੇ ਜੈਰਾਮ ਦੀ ਮੌਤ ਹੋਣੀ ਹੋਈ ਸੀ ਅਜੇ ਸੰਸਕਾਰ ਨਹੀਂ ਕੀਤਾ ਸੀ ਕਹਿਣ ਲੱਗੀ ਤੁਸੀਂ ਆਪਣੇ ਬਚਨ ਸੱਤ ਕਰੋ ਮੇਰਾ ਪਤੀ ਮਰ ਗਿਆ ਹੈ ਉਸ ਨੂੰ ਜੀਵਤ ਕਰੋ ਭਗਤ ਜੀ ਕਹਿਣ ਲੱਗੇ ਕਿ ਇਹ ਰਾਮ ਦੇ ਵਸ ਹੈ ਤੂੰ ਰਾਮ ਨਾਮ ਜਪ ਤੇ ਬੇਨਤੀ ਕਰ ਜੇ ਰਾਮ ਨੂੰ ਮਨਜ਼ੂਰ ਹੋਇਆ ਤਾਂ ਜੀ ਪਵੇਗਾ ਇਸਤਰੀ ਭਗਤ ਜੀ ਦੇ ਬਚਨਾਂ ਨੂੰ ਮੰਨ ਕੇ ਰਾਮ ਦਾ ਨਾਮ ਜਪਣ ਲੱਗ ਪਈ ਪਰਮੇਸ਼ਰ ਦੀ ਖੇਡ ਭਗਤਨੀ ਦੇ ਦਇਆਲ ਹੋ ਗਏ ਤੇ ਜਹਾਂ ਰਾਮ ਜੀਵਤ ਹੋ ਗਿਆ ਸਾਰੇ ਦਿੱਲੀ ਸ਼ਹਿਰ ਵਿੱਚ ਗੱਲ ਫੈਲ ਗਈ ਕਿ ਭਗਤ ਨਾਮਦੇਵ ਜੀ ਨੇ ਮਰਦਾ ਜਿਉਂਦਾ ਕਰ ਦਿੱਤਾ ਇਹ ਗੱਲ ਮੌਲਾਨਿਆਂ ਰਾਹੀ ਬਾਦਸ਼ਾਹ ਮੁਹੰਮਦ ਬਿਨ ਤੁਗਲਕ ਕੋਲ ਵੀ ਪਹੁੰਚੀ ਅਤੇ ਮੋਲਾਣਿਆਂ ਨੇ ਬਾਦਸ਼ਾਹ ਨੂੰ ਕਿਹਾ ਕਿ ਜੇ ਇਹ ਬੰਦੇ ਨੂੰ ਇਸਲਾਮ ਵਿੱਚ ਮਲਾ ਲਏ ਨਾਲ ਇਸਲਾਮ ਧਰਮ ਬਹੁਤ ਤਰੱਕੀ ਕਰੇਗਾ ਇਸ ਲਈ ਇਹ ਸ਼ਕੀਮ ਬਣਾਈ ਗਈ ਕਿ ਦੁੱਧ ਦੇਣ ਵਾਲੀ ਗਊ ਦਾ ਸਿਰ ਵੱਢ ਕੇ ਰੱਖ ਦਿੱਤਾ ਤੇ ਨਾਮਦੇਵ ਜੀ ਨੂੰ ਸਪਾਹੀਆਂ ਰਾਹੀਂ ਕਿਲੇ ਵਿੱਚ ਬੁਲਾ ਕੇ ਕਿਹਾ ਗਿਆ ਕਿ ਜਾਂ ਤਾਂ ਮਰੀ ਗਊ ਜਿਵਾ ਦੇ ਨਹੀਂ ਫਿਰ ਮੌਤ ਲਈ ਤਿਆਰ ਹੋ ਜਾ ਅਤੇ ਖੀਰ ਜਾਂ ਫਿਰ ਮੁਸਲਮਾਨ ਬਣ ਜਾ ਇਸ ਤੋਂ ਅੱਗੇ ਜੋ ਪਗਜੀ ਦੇ ਹੱਡੀ ਵਰਤੀ ਉਹ ਵਾਰਤaraf ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇੰਜ ਦਰਜ ਹੈ ਸੁਲਤਾਨ ਪੁੱਛੇ ਸੁਣ ਬਿਨਾਮਾ ਦੇਖੋ ਰਾਮ ਤੁਮਰੇ ਕਾਮਾ ਦੇਖੋ ਰਾਮ ਤੇਮਾਰੇ ਕਾਮਾ ਬਾਦਸ਼ਾਹ ਮੁਹੰਮਦ ਬਿਨ ਤੁਗਲਕ ਪੁੱਛਦਾ ਹੈ ਈ ਨਾਮਦੇਵ ਸੁਣ ਮੈਂ ਤੇਰੀ ਰਾਮ ਦੀ ਸ਼ਕਤੀ ਵਿਖਣਾ ਚਾਹੁੰਦਾ ਹਾਂ ਨਾਮਾ ਸੁਲਤਾਨ ਨੇ ਬਾਂਧੀ ਲਾ ਦੇਖੋ ਤੇਰਾ ਹਰ ਬਿਠਲਾ ਰਹਾਓ ਬਾਦਸ਼ਾਹ ਨੇ ਮੈਨੂੰ ਨਾਮਦੇਵ ਬਾਦਸ਼ਾਹ ਨੇ ਮੈਨੂੰ ਨਾਮਦੇਵ ਜੀ ਨੂੰ ਗ੍ਰਸਤ ਕਰਕੇ ਬੰਨ ਲਿਆ ਆਖਣ ਲੱਗਾ ਜਿਸ ਰੱਬ ਦੇ ਭਰੋਸੇ ਤੂੰ ਦੂਜਿਆਂ ਮਤਲਬ ਬ੍ਰਾਹਮਣਾਂ ਤੇ ਕਾਜ਼ੀਆਂ ਦੀ ਸ਼ਰਧਾ ਨੂੰ ਰੱਦ ਕਰਦਾ ਹੈ ਮੈਂ ਤੇਰਾ ਰੱਬ ਵੇਖਣਾ ਹੈ ਅਸਲ ਗੱਲ ਅਸੀਂ ਉੱਪਰ ਦੱਸ ਦਿੱਤੀ ਕਗਾ ਨੇ ਗੱਲ ਕਮਾ ਕੇ ਕੀਤੀ ਹੈ ਅਗਲੀ ਤੋਕ ਜਵਾਏ ਨਾ ਗਰਦਨ ਮਾਰੂੰ ਠਾਏ ਮੈਂ ਆਖਿਆ ਕਿ ਐਸੀ ਹੁਣੀ ਕਿਵੇਂ ਹੋ ਸਕਦੀ ਹੈ ਗਲਨੀ ਬਾਤੀ ਵੀ ਮੁਰਦੇ ਜਿੰਦਾ ਹੋਏ ਹਨ ਸਦੀਆਂ ਤੋਂ ਧਾਰਮਿਕ ਸ਼ਰਦਾ ਜਿਨ੍ਹਾਂ ਨੂੰ ਕਰਮਕੰਡਾਂ ਦੀ ਜ਼ਹਿਰ ਦੇ ਕੇ ਮਾਰਿਆ ਹੈ ਉਹ ਕੇਵਲ ਆਖਣ ਨਾਲ ਕਿਵੇਂ ਸੱਚ ਨਾਲ ਖਲੋ ਜਾਣਗੇ ਸਹੀ ਅਰਥ ਬਾਸ਼ਾ ਨੇ ਕਿਹਾ ਕਿ ਜਾਂ ਤੱਕ ਗਉਂ ਜਿਉਂਦੀ ਕਰ ਨਹੀਂ ਇੱਥੇ ਤੇਰੀ ਕਰਤਨ ਲਾ ਕੇ ਮਾਰ ਦੇਵਾਂਗਾ ਇੱਥੇ ਕੱਗਾ ਵੱਲੋਂ ਮਨੋਕਲਪਿਤ ਅਰਥ ਕੀਤੇ ਗਏ ਹਨ ਮੇਰਾ ਕੀਆ ਕਛੁ ਨਾ ਹੋਏ ਕਰਹਿ ਰਾਮ ਹੋਏ ਹੈ ਸੋਏ ਬਾਦਸ਼ਾ ਮੇਰੇ ਕੀਤੇ ਕੁਝ ਨਹੀਂ ਹੋ ਸਕਦਾ ਜਿਸ ਨੂੰ ਰੱਬ ਜਿੰਦਾ ਕਰੇ ਉਹ ਹੁੰਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਜਿੰਦਾ ਮਨੁਕਤੀ ਪ੍ਰਵਾਸ਼ਾ ਹਿਉ ਹੈ ਆਖਾਂ ਜੀਵਾ ਵਿਸਰੇ ਮਰ ਜਾਓ ਆਖਣ ਔਖਾ ਸਚਾ ਨਾਓ ਜਿਵੇਂ ਰੱਬ ਸੱਚ ਦੀ ਸਿਫਤ ਸਲਾਹ ਆਖਦਾ ਹਾਂ ਤਾਂ ਜਿਉਂਦਾ ਹਾਂ ਨਹੀਂ ਤਾਂ ਮੈਂ ਆਤਮਿਕ ਮੌਤੇ ਮਰਦਾ ਹਾਂ ਭਾਵ ਮੇਰੀ ਜਮੀਰ ਮਰਦੀ ਹੈ इस ਗੱਲ ਦਾ पता ਹੁਣ ਦੇ ਗਾਵ ਜਦ ਮੈਨੂੰ ਸੱਚੇ ਦਾ ਨਾਮ ਔਖਾ ਲੱਗਦਾ ਹੈ ਸੋ ਜੀਵਿਆ ਜਿਸ ਮਨ ਵਸਿਆ ਸੋਏ ਨਾਨਕ ਅਵਰਨ ਜੀਵੇ ਕੋਈ ਮਾਝ ਕੀ ਵਾਰ ਪੰਨਾ 144 ਜਿਸ ਮਨੁੱਖ ਦੇ ਮਨ ਵਿੱਚ ਰੱਬ ਵਸ ਗਿਆ ਉਹੀ ਜਿਉਂਦਾ ਸਮਝੋ ਨਾਨਕ ਜੀ ਕਹਿੰਦੇ ਹਨ ਹੋਰ ਕੋਈ ਨਹੀਂ ਜਿਉਂਦਾ ਇਹ ਜਿਸ ਕਿਸਵਟੀ दे ਕਿਤਾਬਚੇ ਦੇ ਲੇਖਕਾਂ ਨੂੰ ਪਰਖਿਆ ਜਾਵੇ ਤਾਂ ਜੋ ਨਤੀਜਾ ਨਿਕਲੇਗਾ ਇਹ ਪਾਟਕ ਹੱચી ਤਰ੍ਹਾਂ ਸਮਝ ਲੈਣਗੇ ਜਦਕਿ ਇਹ ਕਦਮ-ਕਦਮ ਤੇ ਸੱਚ ਦਾ ਪੱਲਾ ਛੱਡ ਕੇ ਬਾਣੀ ਦੇ ਅਰਥਾਂ ਦਾ ਅਨਰਥ ਕਰ ਰਿਹਾ ਬਾਦਸ਼ਾ ਚੜਿਓ ਜਾਏ ਚੜ ਬਾਦਸ਼ਾ ਚੜਿਓ ਅਹੰਕਾਰ ਗਜ ਹਸਤੀ ਦੀਨੋ ਚਮਕਾਰ ਮੇਰੇ ਵੱਲੋਂ ਦਿੱਤੀਆਂ ਦੀਲਾਂ ਤੇ ਸੱਚ ਤੋਂ ਨਾਥ ਰਕਾ ਦੇਖ ਕੇ ਕਿਉਂਕਿ ਖਾਸਕਰ ਬ੍ਰਾਹਮਣ ਤੇ ਕਾਜੀ ਮੁਲਾਣੇ ਦੀ ਚੋਕਣਾ ਵਿੱਚ ਸਾਡੀ ਆਵਾਜ਼ ਦਬਾਉਣੀ ਚਾਹੁੰਦਾ ਸੀ ਰੁਦਨ ਕਰੇ ਨਾਵੇਂ ਕੀ ਮਾਏ ਛੋੜ ਰਾਮ ਕੀ ਨਾ ਭਜੋ ਖੁਦਾਏ ਅਜਿਹੇ ਹਾਲਾਤ ਨੂੰ ਵੇਖ ਕੇ ਮਮਤਾ ਮਾਰੀ ਮੇਰੀ ਮਾਂ ਘਬਰਾ ਗਈ ਤੇ ਵਿਰਲਾਪ ਕਰਦੀ ਹੋਈ ਆਖਣ ਲੱਗੀ ਪੁੱਤਰ ਤੇਰੇ ਨਿਰੰਕਾਰੀ ਰੱਬ ਵਾਲੀ ਗੱਲ ਇਹਨਾਂ ਨੂੰ ਪਸੰਦ ਨਹੀਂ ਤੂੰ ਆਪਣੀ ਜਾਨ ਬਚਾਉਣ ਲਈ ਇਹਨਾਂ ਦੇ ਅਨੁਸਾਰ ਖੁਦਾ ਆਖ ਦੇ ਭਾਵ ਇਹਨਾਂ ਦੀ ਬੋਲੀ ਬੋਲ ਸਹੀ ਅਰਥ ਸਰਵਵਿਆਪੀ ਰਾਮ ਤੇ ਅੱਲਾ ਇੱਕੋ ਹਨ ਇਸ ਲਈ ਜੇ ਖੁਦਾ ਕਹਿਣ ਨਾਲ ਜਾਣਬਾਜ਼ਦੀ ਹੈ ਤਾਂ ਖੁਦ ਖੁਦਾ ਕਰਨ ਲੱਗ ਜਾ ਨਾ ਹੋ ਤੇਰਾ ਪੁੰਗੜਾ ਨਾ ਤੂੰ ਮੇਰੀ ਮਾਏ ਪਿੰਡ ਪੜੇ ਤੋ ਹਰ ਗੁਣ ਗਾਏ ਏ ਮਾਂ ਤੁਮੈਨੂੰ ਜਨਮ ਦਿੱਤਾ ਪਾਲਿਆ ਤੇਰਾ ਧੰਨਵਾਦ ਪਰ ਜੀ ਗੁਲਾਮੀ ਵਾਲੀ ਸਿੱਖਿਆ ਦੇਣ ਵਾਲੀ ਤੂੰ ਮੇਰੀ ਮਾਂ ਮਾਂ ਨਹੀਂ ਹੋ ਸਕਦੀ पर ਸੱਚ ਹੱਕ ਵਾਲੇ ਸੂਲ नहीं ਛੱਡਾਂਗਾ ਸਹੀ ਅਰਥ ਭਾਵੇਂ ਮੇਰੇ ਸਰੀਰ ਨੂੰ ਕਿੰਨੇ ਹੀ ਕਸ਼ਟ ਦੇਣ ਪਰ ਨਿਰਪੈ ਰੱਬ ਦਾ ਭਗਤ ਹੁਣ ਕਰਕੇ ਮੈਂ ਮੌਤੇ ਡਰਾਵੇ ਨਾਲ RAM KIHNA ਨਹੀਂ ਛੱਡਾਂਗਾ ਕਰੇ ਗਜਿੰਦ ਸੁੰਡ ਕੀ ਝੋਟ ਨਾਮਾ ਉਪਰੇ ਹਰ ਕੀ ਝੋਟ ਹਾਥੀ ਸੁੰਡ ਨਾਲ ਸੱਟਾਂ ਮਾਰਦਾ ਬਦਲਦਾ ਪ੍ਰਤੀਤ ਹੁੰਦਾ ਹੈ। ਇਹਨਾਂ ਅਰਥਾਂ ਬਾਰੇ ਮੈਂ ਕੱਗਾਂ ਨੂੰ ਪੁੱਛਿਆ ਕਿ ਤੈ ਕਦੇ ਰਾਜਾ ਜਾਂ ਰਾਜੇ ਦਾ ਰਾਜ ਦੇਖਿਆ ਹੈ? ਇਸ ਦੇ ਪਲਟਵਾਰ ਵਿੱਚ ਕੱਗਾਂ ਨੇ ਹੀ ਸਵਾਲ ਮੇਰੇ ਤੇ ਕਰ ਦਿੱਤਾ। ਉੱਤਰ ਵਿੱਚ ਮੈਂ ਕਿਹਾ ਮੈਂ ਦੇਖਿਆ ਹੈ। ਤੈ ਨਹੀਂ ਦੇਖਿਆ। ਇਸ ਲਈ ਬ੍ਰੈਕਟ ਵਿੱਚ ਲਿਖਿਆ ਹੈ ਕਿ ਇੱਥੇ ਨਾਮਦੇ ਜੀ ਦੇ ਸਾਥੀ ਆਗੇ ਲੱਗਦੇ ਹਨ। ਕਿਸੇ ਦੀ ਜ਼ਰੂਰਤ ਨਹੀਂ ਕਿ ਬਾਦਸ਼ਾਹ ਦੇ ਮਹਿਲ ਵਿੱਚ ਆਪਣੀ ਮਰਜ਼ੀ ਨਾਲ ਕੋਈ ਵੜ ਜਾਂਦਾ। ਹੁਣ ਤੂੰ ਪ੍ਰਧਾਨ ਮੰਤਰੀ ਦੀ ਕੋਠੀ ਜਾਂ ਰਾਸ਼ਟਰਪਤੀ ਦੀ ਭਵਨ ਵਿੱਚ ਵੀ ਮਰਜ਼ੀ ਨਾਲ ਵੜ ਕੇ ਦਿਖਾ ਤੇ ਫਿਰ ਪਤਾ ਚੱਲੋ ਚੱਲ ਜਾਊ ਜੇ ਅੱਜ ਦੇ ਲੋਕ ਰਾਜ ਵਿੱਚ ਕੋਈ ਨਹੀਂ ਵੜ ਸਕਦਾ ਤਾਂ ਸ਼ਖਸ਼ੀ ਰਾਜ ਵੇਲੇ ਉਹ ਵੀ ਜੋ ਵਿਦੇਸ਼ੀ ਹਮਲਾਵਰ ਬਾਦਸ਼ਾਹ ਬਣੀ ਜਿਹਨਾਂ ਦਾ ਨਾਮ ਸੁਣ ਕੇ ਦੁਨੀਆ ਥਰਸਰ ਕੰਬਣ ਲੱਗ ਜਾਂਦੀ ਸੀ ਉਸ ਮੈਲ ਵਿੱਚ ਕੌਣ ਦਾਖਲ ਹੋ ਸਕਦਾ ਹੈ ਜੋ ਜੋ ਜ਼ੁਲਮ ਇਹਨਾਂ ਵਿਦੇਸ਼ੀ ਹਾਕਮਾਂ ਨੇ ਸਾਡੇ ਦੇਸ਼ ਦੀ ਜਨਤਾ ਤੇ ਕੀਤੇ ਪੜ ਸੁਣ ਕੇ ਹੀ ਬੰਦਾ ਕੰਬ ਜਾਂਦਾ ਹੈ ਕੋਈ ਗੱਲ ਨਾ ਬਣਦੀ ਦੇਖਗਾ ਕਹਿਣ ਲੱਗ ਗਲ ਮਹਿਲ ਦੀ ਨਹੀਂ ਇਹ ਵਰਤਾਰਾਮ ਚਰਸਤੇ ਵਿੱਚ ਹੋ ਰਿਹਾ ਸੀ ਮੈਨੂੰ ਫਿਰ ਕਹਿਣਾ ਪਿਆ ਕਿ ਇਹ ਇਸ ਤੋਂ ਵੀ ਪਰੇ ਦਾ ਕੁਫਰ ਹੈ ਬਾਸ਼ਾ ਨੂੰ ਕੀ ਲੋੜ ਪਈ ਧੁੱਪ ਵਿੱਚ ਰਸਤੇ ਵਿੱਚ ਖੜੇ ਕੱਗਾ ਨਿਰੁੱਤਰ ਹੋ ਗਿਆ ਭਗਤ ਜੀ ਤਾਂ ਕਹਿ ਰਹੇ ਹਨ ਕਿ ਹਾਥੀ ਦੀ ਸੁੰਡ ਦੀ ਛੱਟ ਤੋਂ ਮੈਂ ਹਰੀ ਜੀ ਦੀ ਕਿਰਪਾ ਨਾਲ ਬਚ ਗਿਆ ਪਰ ਕੱਗਾ ਜੀ ਜੀ ਇਸ ਨੂੰ ਕਾਮਰੇਡਾਂ ਦੀ ਮਿਹਰਬਾਨੀ ਨਾਲ ਜੋੜਦੇ ਹਨ ਕਾਜ਼ੀ ਮੁਲਾਹ ਕਰੇ ਸਲਾਮ ਇਹਨਿੰਦੂ ਮੇਰਾ ਮਲਿਆ ਮਾਨ ਬਾਦਸ਼ਾਹ ਆਖਦਾ ਹੈ ਕਿ ਕਾਜੀ ਮੁਲਾ ਸਮੇਤ ਸਾਰੇ ਨੂੰ ਨਮਸਕਾਰਾਂ ਕਰਦੇ ਹਨ ਪਰ ਇਹ Hindu ਚੁਕਣ ਤੋਂ ਚੁਕਣ ਤੋਂ ਇਨਕਾਰੀ ਹੈ ਇਸ ਤਰ੍ਹਾਂ ਮੇਰੀ ਬਹੁਤ ਬੇਇੱਜ਼ਤੀ ਹੋ ਰਹੀ ਹੈ ਭਾਵੇਂ ਕੇ ਨਾਮਦੇਵ ਜੀ Hindu ਹੁਣ ਤੋਂ ਇਨਕਾਰ ਕਰਦੇ ਹਨ Hindu ਅੰਨਾ ਤੁਰਕੂ ਕਾਣਾ ਪਰ ਮੁਸਲਮਾਨ Hindu ਕਹਿ ਕੇ ਹੀ ਪੁਕਾਰਦਾ ਸੀ ਜਿਵੇਂ ਸਿੱਖਾਂ ਨੂੰ ਇੱਕ ਦੇ ਜੋਰ ਦੇ ਅਜੇ ਤੱਕ Hindu ਹੀ ਕਿਹਾ ਜਾ ਰਿਹਾ ਹੈ ਬਾਦਸ਼ਾਹ ਬੇਨਤੀ ਸੁਨੇ ਹੋ ਨਾਮੇ ਸਰ ਪਰ ਸੋਨਾ ਲਿਓ ਮੇਰੇ ਨਾਮ ਦੇ ਮੇਰੇ ਭਾਵਨਾਮ ਦੇਵ ਦੇ ਹਮਦਰਦ ਲੋਕ ਲੋਕਾਂ ਇਕੱਠੇ ਹੋ ਕੇ ਰਾਜੇ ਕੀ ਨਿਮਰਤਾ ਨਾਲ ਬੇਨਤੀ ਕੀਤੀ ਕਿ ਅਸੀਂ ਨਾਮਦੇਵ ਦੇ ਬਰਾਬਰ ਸੋਨਾ ਤੋਲ ਕੇ ਦੇਣ ਨੂੰ ਤਿਆਰ ਹਾਂ ਪਰ ਇਸ ਨੇਕ ਨੂੰ ਛੱਡ ਦਓ ਗਰੀਬ ਲੋਕਾਂ ਕੋਲ ਇੰਨਾ ਸੋਨਾ ਹੋਣਾ ਔਖਾ ਹੈ ਪਰ ਪਿਆਰੇ ਲਈ ਕੁਝ ਵੀ ਹੋ ਸਕਦਾ ਹੈ ਅਸਲੀਅਤ ਇਹ ਹੈ ਕਿ ਤਨਾੜ ਹਿੰਦੂਆਂ ਨੇ ਇੱਕ ਵਜ਼ੀਰ ਰਹੀਂ ਬਾਦਸ਼ਾਹ ਨੂੰ ਅਰਜ਼ੀ ਕੀਤੀ ਕਿ ਨਾਮਦੇਵ ਬਰਾਬਰ ਤੋਲ ਕੇ ਸੋਨਾ ਲੈ ਲਵੋ ਅਤੇ ਇਸ ਨੂੰ ਛੱਡ ਦੇਵੋ ਉਹ ਜਮਾਨੇ ਵਿੱਚ ਆਮ ਦਸਤੂਰ ਸੀ ਮਾਲ ਲਿਓ ਤਾਂ ਦੋਜਕ ਪਰੋਂ ਦੀਨ ਛੋੜ ਦੁਨੀਆ ਕੋ ਰਾਜੇ ਆਖਿਆ ਨਹੀਂ ਮੇਰਾ ਮਜੇ ਮੈਨੂੰ ਰਿਸ਼ਵਤ ਲੈਣ ਦੀ ਆਗਿਆ ਨਹੀਂ ਦਿੰਦਾ ਇਸ ਤਰ੍ਹਾਂ ਮੈਂ ਧਰਮ ਤੋਂ ਗਿਰ ਨਰਕਾਂ ਦਾ ਭਾਗੀਦਰ ਨਹੀਂ ਬਣਨਾ ਚਾਹੁੰਦਾ ਪਾਪ ਉਹ 베ੜੀ ਹਾਥੋ ਤਾਲ नामा ਗAVE ਗੁਣ ਗੋਪਾਲ ਮੈਨੂੰ ਬੇੜੀਆਂ ਹੱਥ ਖੜੇ ਨਾਲ ਜਕੜਿਆ ਹੋਇਆ ਸੀ ਫਿਰ ਵੀ ਕਿਵੇਂ ਹੱਸ ਕੇ ਬੇਖੌਫ ਰੱਬ ਦੀ ਰਜਾ ਵਿੱਚ ਉਹਦੇ ਗੁਣ ਗਾਉਂਦਾ ਰਿਹਾ ਸ਼ਾਇਦ ਨਾਮਦੇਵ ਜੀ ਨੇ ਕਰਾਰੀ ਝਾੜ ਮਾਰੀ ਹੋਣੀ हे राजन रिश्वत लेनी दोजक ਪੈਣਾ ਹੈ ਤਾਂ ਸੱਚਾਈ ਕੁਚਲਣਾ ਗਰੀਬਾਂ ਦੇ ਜ਼ੁਲਮ ਕਰਨਾ ਕਿਹੜਾ ਧਰਮ ਹੈ ਗੰਗ ਜਮਨ ਜੋ ਉਲਟੀ ਬਹੇ ਤੋ ਨਾਮਾ ਹਰ ਕਰਤਾ गंगा यमुना دریاਵਾਂ ਦੇ ਰਹਿਣਤਾ ਵਿੱਚ ਕੁਲਟੇ ਵਹਿਣ ਪਰ ਮੈਂ ਕਿਸੇ ਤਰ੍ਹਾਂ ਦੇ ਡਰਾਮਿਆਂ ਗਿਣ ਨਹੀਂ ਚੁਕਾਂਗਾ ਨੋਟ 8ਵੰਦ ਤੋਂ ਲੈ ਕੇ 13ਵੰਦ ਤੱਕ ਪੱਖ ਪੇਸ਼ ਕਰਦੇ ਹਾਂ ਸਜਾ ਤੇ ਰੋਕ ਵੀ ਲੱਗੀ ਜਾਪਦੀ ਹੈ ਤੇ ਹੋਰ ਸਮਾਂ ਵੀ ਮਿਲ ਗਿਆ ਜਾਪਦਾ ਹੈ ਕਿਉਂਕਿ ਪਹਿਲਾਂ ਹਾਥੀ ਦੇ ਪੈਰਾਂ ਹਟਕੁ ਕਿਉਂਕਿ ਹਾਥੀ ਦੀ ਸਜ਼ਾ ਦੇ ਚੁੱਕੇ ਸੀ ਪ੍ਰਣਾਮਦੇ ਜੀ ਦਾ ਕੁਝ ਨਹੀਂ ਸੀ ਵਿਗੜਿਆ ਸੀ ਸਾਤ ਕੜੀ ਜਾਂ ਬੀਤੀ ਸੁਣੀ ਅਰਜੁਨ ਆਇਓ ਤ੍ਰਿਭਵਨ ਤਣੀ ਬਾਦਸ਼ਾਹ ਨੇ ਸੱਤ ਕੜੀਆਂ ਮਸਲ ਨੂੰ ਸੁਲਝਾਉਂਦੇ ਆ ਲਗਾ ਦਿੱਤੀਆਂ ਅਤੇ ਹੋਰ ਸਮਾਂ ਨਾ ਦੇਣ ਬਾਰੇ ਵੀ ਆਖਿਆ ਤੇ ਹੋਰ ੜ ਇਹ ਵੀ ਆਖਿਆ ਤੇਰਾ ਰੱਬ ਅਜੇ ਤੱਕ ਪ੍ਰਗਟ ਨਹੀਂ ਹੋਇਆ ਸਿਰਫ ਆਪਣੇ ਗਲਤ ਫੈਸਲੇ ਨੂੰ ਵੀ ਧੱਕੇ ਨਾਲ ਠੀਕ ਸਾਬਤ ਕਰਨਾ ਚਾਹੁੰਦਾ ਸੀ ਪਾਉ ਵੇ ਇਵੇਂ ਹੋ ਰਿਹਾ ਪ੍ਰਤੀਤ ਹੁੰਦਾ ਹੈ ਜਿਵੇਂ ਗਵਾਹ ਦੇ ਸਬੂਤ ਹੁੰਦੇ ਆ 1947 ਤੋਂ ਪਹਿਲਾਂ ਤੇ 1947 ਤੋਂ ਬਾਅਦ ਅਤੇ 1948 ਵੇਲੇ ਦੇ ਕਤਲੇਆਮ ਦਾ ਸਿੱਖਾਂ ਨੂੰ ਕੋਈ ਇਨਸਾਫ ਜਾਣਬੁੱਝ ਕੇ ਨਾ ਦਿੱਤਾ ਗਿਆ ਇਹ ਸਾਰੀ ਵਿਚਾਰਕ ਗਦੀ ਮਨੋਕਲਪਤ ਹੈ ਤੇ ਹਕੀਕਤ ਨਾਲ ਕੋਈ ਵਾਸਤਾ ਨਹੀਂ ਸਹੀ ਅਰਥ ਜਦ ਤਕਰੀਬਨ 3 ਘੰਟੇ ਇੱਕ ਘੜੀ 24 ਮਿੰਟ ਦੀ ਹੁੰਦੀ ਹੈ ਗੁਜ਼ਰ ਗਏ ਤਾਂ ਤਰਲੋਕੀ ਦਾ ਮਾਲਕ ਅਜੇ ਵੀ ਨਾ ਆਇਆ ਪਰ ਨਾਮਦੇਵ ਜੀ ਅਜੇ ਵੀ ਮਸਤੀ ਵਿੱਚ ਭਜਨ गा ਰਹੇ ਨੋਟ ਗੁਰਮਤਿ ਰੱਬ ਨੂੰ ਅਜੂਨੀ ਮੰਨਦੀ ਹੈ ਉਹ ਕਦੀ ਵੀ ਜੂਨਾ ਵਿੱਚ ਨਹੀਂ ਆਉਂਦਾ ਸਗੋ ਕਰੜੀ ਚੇਤਾਵਨੀ ਹੈ ਸੋ ਮੁਖ ਜਲੋ ਜਿਤ ਕਹੋ ਠਾਕੁਰ ਜੂਨੀ ਸੋ ਨਾਮਦੇਵ ਜੀ ਦੀ ਨੀਕੀ ਨੇਕੀ ਦੇ ਤਦੋਂ ਚਾਰੇ ਪਾਸੇ ਡੰਕੇ ਵੱਜ ਚੁੱਕੇ ਸਨ ਬ੍ਰਾਹਮਣਾ ਮੁਲਾਣਿਆਂ ਨੂੰ ਵੀ ਪਹਿਲਾਂ ਵੀ ਕਈ ਵਾਰ ਵੰਗਾਰ ਚੁੱਕੇ ਸਨ ਇਸ ਤਰ੍ਹਾਂ ਇਹਨਾਂ ਦੀ ਨੇਕੀ ਪਰਵਕਾਰਨ ਡਰਤਾ ਸੱਚ ਤੇ ਪਹਿਰਾ ਦਿਨ ਵਾਲਾ ਗਰੀਬਾਂ ਦਾ ਸਮਰਥਕ ਹੋਣ ਕਰਕੇ ਕਾਫੀ ਲੋਕ ਇੰਨਾਂ ਦੇ ਇੱਕ ਸ਼ਰਤੇ ਜਾਨਵਰਨ ਵਾਲੇ ਪੈਦਾ ਹੋਣ ਲੱਗ ਪਏ ਸਨ ਜਦੋਂ ਹਮਾਇਤੀਆਂ ਨੂੰ ਪਤਾ ਲੱਗਦਾ ਗਿਆ ਕਿ ਨਾਮਦੇਵ ਜੀ ਨੂੰ ਬਗੈਰ ਕਸੂਰ ਤੋਂ ਬਨ ਕੇ ਹਾਥੀ ਅੱਗੇ ਸੁੱਟਿਆ ਗਿਆ ਹੈ ਤਾਂ ਉਹ ਵਹੀਰਾਂ ਘੱਟ ਕੇ ਉਧਰ ਨੂੰ ਚੱਲ ਪਏ ਗੁਰਬਾਣੀ ਵਿੱਚ ਬੇਅੰਤ ਜਗਾ ਸੰਗਤ ਦੀ ਮਹਿਮਗਾਈ ਜਿਵੇਂ ਵਿੱਚ ਸੰਗਤ ਹਰ ਪ੍ਰਭ ਅਸੇ ਇੱਥੇ ਫੇਰ ਇੱਕ ਗੱਲ ਜੀ ਆਪਣੀ ਕਾਮੇਡੀ ਵਿਚਾਰਨ ਨੂੰ ਗੁਰਬਾਨੀ ਦੀ ਚਾਸ਼ਨੀ ਵਿੱਚ ਧੋਬ ਕੇ ਪਾਠਕਾਂ ਨੂੰ ਗੁੰਮਰਾਹ ਕਰ ਰਹੇ ਹਨ ਜਦੋਂ ਨਾਮ ਜੀ ਦਾ ਛੱਪਰ ਬਣਾਉਣ ਸੰਬੰਧੀ ਸ਼ਬਦ ਪੜ੍ਹਦੇ ਹਨ ਤਾਂ ਉੱਥੇ ਵੀ ਸਤਸੰਗੀ ਜਨ ਨੇ ਨਾਮੇ ਦੇ ਪਿਆਰ ਵਿੱਚ ਭਿੱਜ ਕੇ ਬਹੁਤ ਛੇਤੀ ਉਹਨਾਂ ਦਾ ਸੁੰਦਰ ਮਕਾਨ ਤਿਆਰ ਕਰ ਦਿੱਤਾ ਇਸ ਸੋਹਣੇ ਮਕਾਨ ਨੂੰ ਵੇਖ ਕੇ ਗਵਣਨ ਪੈਣ ਪੁੱਛਦੀ ਹੈ ਕਿ ਕਿਵੇਂ ਤਿਆਰ ਕੀਤਾ ਇਹ ਮਕਾਨ ਅਸਲ ਵਿੱਚ ਇੱਥੇ ਹੀ ਜੀਵਨ ਛਪੜੀ ਤਾਂ ਸਤਸੰਗੀਆਂ ਦੁਆਰਾ ਸੋਹਣਾ ਬਣਨਾ ਹੀ ਹੈ ਤਾ ਨਾਮਦੇਵ ਜੀ ਦੱਸਦੇ ਹਨ ਪਾੜ ਪਾੜ ਪਰੋਸ਼ਨ ਪੂਛਲੇ ਨਾਮਾ ਕਾ हो ਛਵਾਈ ਹੋ ਤੋਪੇ ਦੁਗਣੀ हो ਦੇਹੋ ਮੋਕੋ बेड़ी दे ਬਤਾਈ ਹੋ ਰੀ ਭਾਈ 베ਡੀ ਦੇ ਨਾ ਜਾਈ ਦੇਖ 베ਡੀ ਰਹਿਓ ਸਮਾਈ ਹਮਾਰੇ 베ਡੀ ਪ੍ਰਾਣ ਆਧਾਰਾ ਰਹਾਉ ਕਰ ਚੌਥਾ ਸੂਰਤ ਇੱਥੇ ਵੀ ਛਪਰੀ ਰੱਬ ਨੇ ਸ੍ਰੀਰ ਧਾਨਗਰ ਕਿੰਨੀ ਨਹੀਂ ਬਣਾਈ ਸਕੋ ਸਤਸੰਗੀ ਜਨਾਂ ਨੂੰ ਹੀ ਰੱਬ ਰੂਪ ਗੁਰਮਤ ਪ੍ਰਮਾਨ ਕਰਦੀ ਹੈ ਜਿਵੇਂ ਆਪਣੇ ਸੇਵਕ ਕੀ ਦੀ ਰੱਖਿਆ ਲਈ ਗਰੁੜ ਤੇ ਸੱਚ ਪ੍ਰਭੂ ਗਰੁੜ ਤੇ ਪ੍ਰਭੂ ਜੀ ਆਏ ਬਹੁਤ ਸਿਰਕ ਪਾਈ ਤੋਂ ਬਾਅਦ ਫਿਰ ਵੀ ਗਰੀਬਾਂ ਸੱਚ ਦੇ ਪਾਂਧੀਆ ਨੂੰ ਕੋਈ ਨਿਆਂ ਦੀ ਆਸ ਨਾ ਬੱਜੀ ਤਾਂ ਗਰੁੜ ਚੜਕੇ ਆਏ ਗੋਪਾਲ ਭਾ ਬਹਾਦਰ ਲੋਕਾਂ ਮੈਨੂੰ ਆਖਿਆ ਕਹੇ ਤਾਂ ਤਰਨ ਕੋਡੀ ਕਰੂੰ ਕਹੇ ਤਾਂ ਲੈ ਕੇ ਉਪਰ ਧਰਾਂ ਪ੍ਰਭੂ ਪਿਆਰ ਵਾਲੇ ਸਾਧ ਸੰਗੀਆਂ ਨੇ ਕਿਹਾ ਨਾਮਦੇਵ ਜੀ ਜਿਹ ਇਜਾਜ਼ਤ ਦੇਉ ਦਾ ਧਰਤੀ ਟੇਢੀ ਕਰ ਦਈਏ ਆਖੇ ਤਾਂ ਹੇਠਲੀ ਉੱਪਰ ਕਰ ਦਈਏ ਨੋਟ ਇਸ਼ਾਰਾ ਰਾਜਪਾਗ ਟੇਡਾ ਕਰਨ ਵਾਲ ਤੇ ਮਹਾਰਾਜਾ ਨਰਜੀਤ ਸਿੰਘ ਦੇ ਰਾਜਪਾਲ ਵੇਲੇ ਅਤੇ ਬੋਤਾ ਸਿੰਘ ਗਰਜਾ ਸਿੰਘ ਦੀ ਹੀ ਮਿਸਾਲ ਕਾਫੀ ਹੈ ਇਸ ਤੋਂ ਇਲਾਵਾ ਸਖਾ ਨੇ ਹੋਰ ਵੀ ਬਹੁਤ ਬਹਾਦਰੀ ਜੌਰ ਦਿਖਾਏ ਗਿਣਤੀ ਭਾਵੇਂ ਥੋੜੀ ਸੀ ਕਹ ਤਮੂਈ ਗਉ ਸਭ ਕੋਈ ਦੇਖੇ ਪਤਿਆਏ ਜੇ ਅੱਖਾਂ ਤਾਂ ਮੁਰਦਿਆਂ ਵਰਗੇ ਸੱਚ ਤੋਂ ਬੇਮਖ ਹੋ ਚੁਕੇ ਲੋਕਾਂ ਨੂੰ ਬਹਾਦਰੀ ਨਾਲ ਰਾਜ ਬਹਾਦਰੀ ਵਾਲੇ ਕਾਰਜ ਕਰਵਾ ਦਈਏ ਭਾਵੇਂ ਜ਼ੁਲਮ ਦੀ ਹਾਮੀ ਇਹ ਵੀ ਭਰ ਸਕਦੇ ਹਨ ਸਾਰੇ ਤੁਸਲਿਨਾ ਵੇਖ ਲੈਣਗੇ ਕਿ ਨਾਮਦੇਵ ਦੇ ਨਿਰਗੁਣ ਸਰੂਪ ਪ੍ਰਭੂ ਦੇ ਸਿਧਾਂਤ ਕਿੰਨੇ ਬਲਸ਼ਾਲੀ ਹਨ ਪਾਖੰਤਨ ਬਾਜ ਵਜਾਇਲਾ ਗਰੁਰ ਉਰ ਚੜੇ ਗੋਬਿੰਦਾਇਲਾ ਇੱਕਦਮ ਖੰਬਾਂ ਦੀ ਫੜਫੜਾਟ ਸੁਣੀ ਕਿਉਂਕਿ ਗਰੁਰ ਤੇ ਚੜ ਕੇ ਗੋਬਿੰਦ ਆ ਗਿਆ ਕੱਗਾ ਜੀ ਨੇ ਬੰਦ 15 ਦੇ ਅਰਥਾ ਠੀਕ ਕਰ ਦਿੱਤੇ ਪਰ ਪਛਤਾ ਹਨ ਕਿ ਰੱਬ ਗਰੁਰ ਤੇ ਕਿਵੇਂ ਚੜ ਕੇ ਆ ਸਕਦਾ ਹੈ ਕਿਉਂਕਿ ਸ਼ਨਾਦਨ ਤਰਮ ਵਿੱਚ ਗਰੜ বিষ্ণੂ ਦੀ ਸਵਾਰੀ ਮੰਨੀ ਗਈ ਹੈ ਅਤੇ ਗੁਰਬਾਣੀ ਵਿੱਚ বিষ্ণੂ ਨੂੰ ਪਰਮੇਸ਼ਰ ਨਹੀਂ ਮੰਨਿਆ ਗਿਆ ਵੈਸੇ ਵੀ ਕੱਗਾ ਦਾ ਪਰਮੇਸ਼ਰ ਤੇ ਕੋਈ ਭਰੋਸਾ ਨਹੀਂ ਉਹ ਹੈ ਵੀ ਕਿ ਨਹੀਂ ਇਸ ਲਈ ਕੱਗਾ ਨੇ ਹੀ ਵੜਿਆਈ ਨਾਮਦੇਵ ਦੇ ਹਮਾਇਤੀਆਂ ਦੇ ਖਾਤੇ ਹੀ ਪਾ ਦਿੱਤੀ ਜੇ ਕੱਗਾ ਇਹਨਾਂ ਨੂੰ ਕਾਮਰੇਡ ਕਹਿ ਦਿੰਦਾ ਤਾਂ ਪਾਜੁਗੜ अथवा ਸਤਸੰਗੀ ਲਿਖ ਦਿੱਤਾ ਇਸ ਤੋਂ ਅੱਗੇ ਨਾਮਦੇਵ ਦੀ ਛਪਰੀ ਬਣਾਉਣ ਦਾ ਸਿਹਰਾ ਹਮਾਇਤੀਆਂ ਜਾਂ ਕੱਗਾ ਜੀ ਦਾ ਕਹਿਣਾ ਹੈ ਪਰਮੇਸ਼ਰ ਜਨਮ ਨਹੀਂ ਲੈਂਦਾ ਜੇ ਜਨਮ ਲੈ ਵੀ ਲਵੇ ਕਦੋਂ ਜਵਾਨ ਤੇ ਤਾਕਤਵਰ ਹੋਇਆ ਹੈ ਤੇ ਕਦ ਉਹ ਸੇਵਕ ਦੀ ਸਹਾਇਤਾ ਕੀਤੀ ਇਨੇ ਚਿਰ ਵਿੱਚ ਸੇਵਕ ਦਾ ਬੇੜਾ ਡੁੱਬ ਜਾਵੇਗਾ ਇਸ ਲਈ ਸਭ ਗਲਤ ਹੈ ਸਤ ਨੇ ਹੀ ਨਾਮਦੇਵ ਨੂੰ ਬਚਾਇਆ ਹੈ ਪਰ ਗੁਰਬਾਣੀ ਦੱਸ ਰਹੀ ਹੈ ਜਿੱਥੇ ਅਰਾਧੀ ਹੈ ਤਿੱਥੇ ਹਰ ਸਹਾਈ ਇੰਨੀ ਜਲਦੀ ਹੋਰ ਕੋਈ ਸਹਾਇਤਾ ਨਹੀਂ ਕਰ ਸਕਦਾ ਜਿੰਨੀ ਜਲਦੀ ਪ੍ਰਮਾਤਮਾ ਅਰਦਾਸ ਸੁਣ ਕੇ ਬਹੁੜਦਾ ਹੈ ਨਿੰਦਕ ਮਾਰੇ ਤਤਕਾਲ ਖਿਆ ਟਿਕਣਾ ਦਿੱਤੇ ਪ੍ਰਭ ਦਾਸ ਕਾ ਦੂਖ ਨਾ ਖਬ ਸਕੇ ਫੜ ਜੁਨੀ ਜੁਤੇ ਮੁੱਥੇ ਵਾਲ ਪਿਛਾੜੀ ਜਿ ਮਾਰਗ ਮੁੱਤੇ ਦੁਖ ਲੱਗੇ ਬਿਲਾਨਿਆਂ ਨਰਕ ਘੋਰ ਸੁਤੇ ਕੰਠ ਲਾਏ ਦਾਸ ਰਖੇ ਨਾਨਕ ਹਰ ਦੂਤ ਦੁਸ਼ਮਨ ਸਭ ਤੋਂ ਜਿੰ ਤਿੰਨ ਪ੍ਰਗਟ ਪ੍ਰਤਾਪ ਤੁਮਾਰਾ ਜੋ ਤੁਮਰੇ ਭਗਤ ਦੁਖਾਏ ਉਹ ਤਤਕਾਲ ਤੁਮਾਰਾ ਨਿਰਖੋਂ ਤੁਮਰੀ ਔਰ ਹਰਨੀਤ ਮਰਾਰ ਸਹਾਏ ਹੋ ਦਾਸ ਕੋ ਕਰਗ ਹੈ ਉਧਰੁ ਮੀਤ ਰਹਾਉ ਸੁਣੀ ਬੇਨਤੀ ਠਾਕੁਰ ਮੇਰਾ ਖਸਮਾ ਨਾ ਕਰਿ ਆਪ ਨਾਨਕ ਅਨੰਦ ਭਏ ਦੁਖ ਭਾਗੇ ਸਦਾ ਸਦਾ ਹਰ ਜਾਪ ਅੱਗੇ ਹੋਰ ਸ਼ਬਦ ਸੁਰਮਾਉਂਦੇ ਹਰ ਜੁਗ ਜੁਗ ਭਗਤ ਉਪਾਇ ਪੈਜ ਰਖਦਾ ਆਇਆ RAM ਰਾਜੀ ਹਰਨਾਖਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਉ ਮੁਖ ਲਾਇਆ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ ਸਤਿਬਚਨ ਨਾਨਕ ਕਹੈ ਪ੍ਰਗਟ ਸਭ ਮਾਹੀ ਪ੍ਰਭ ਕੇ ਸੇਵਕ ਸਰਣ ਪ੍ਰਭ ਤਿਨ ਕੋ ਪਉ ਨਾਹੀ ਅਗੇ ਹੋਰ ਸ਼ਬਦ ਜਿ ਫਰਮਾਉਂਦੇ ਹਨ ਭਗਤਾ ਕੀ ਸਦਾ ਤੂੰ ਰਖਦਾ ਹਰ ਜੀਉ ਤੁਰ ਤੂੰ ਰਖਦਾ ਆਇਆ ਪਹਿਲਾ ਪ੍ਰਹਿਲਾਦ ਜਨ ਤੂੰ ਦੁਰਾਖ ਲਈ ਹਰ ਜੀਉ ਹਰਨਾਕਸ਼ਮਾਰ ਪਚਾਇਆ ਗੁਰਮੁਖਾ ਨੂੰ ਪ੍ਰਤੀਤ ਹੈ ਹਰ ਜੀਉ ਮਨਮੁਖ ਪਰਮ ਭਲਾਇਆ ਹਰ ਜੀ ਇਹ ਤੇਰੀ ਵਡਿਆਈ ਭਗਤਾ ਕੀ ਪੈਜ ਰਖ ਤੂੰ ਸੁਆਮੀ ਭਗਤਾਂ ਕੀ ਪੈਜ ਰੱਖ ਤੂੰ ਸੁਆਮੀ ਭਗਤ ਤੇਰੀ ਸਰਣਾਈ ਸਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਕਿਤੇ ਵੀ ਜ਼ਿਕਰ ਨਹੀਂ ਆਇਆ ਕਿ ਭਗਤਾਂ ਨੇ ਪਰਮੇਸ਼ਰ ਤੋਂ ਸਿਵਾਏ ਕਿਸੇ ਹੋਰ ਕੋਲ ਸਹਾਈਤਾ ਲਈ ਬੇਨਤੀ ਕੀਤੀ ਹੋਵੇ ਜਾਂ ਕਿਸੇ ਜਾਂ ਕਿਸੇ ਹਮਾਇਤਿਆਂ ਦੀ ਸਹਾਈਤਾ ਨਾਲ ਕੋਈ ਭਗਤ ਬਚਿਆ ਹੋਵੇ ਇਹ ਸਭ ਕਾਮਰੇਡੀ ਵਿਚਾਰਤਾਰਾ ਹੈ ਭਗਤ ਨਾਮਦੇਵ ਜੀ ਆਪ ਦੱਸ ਰਹੇ ਹਨ ਕਿ ਮੇਰੀ ਸਹਾਈਤਾ ਕਿਸ ਨੇ ਕੀਤੀ ਤੇ ਛੱਪਰੀ ਕਿਸੇ ਨੇ ਬਣਾਈ ਉਸ ਦਾ ਵਰਣਨ ਗਰੁੜ ਚੜੇ ਗੋਬਿੰਦਾਇਲਾ ਤੋਂ ਅਗਲੇ ਸ਼ਬਦ ਵਿੱਚ ਇਸ ਤਰ੍ਹਾਂ ਆਉਂਦਾ ਹੈ ਜੋ ਗੁਰਦੇਉ ਕੰਧ ਨਹੀਂ ਹਰੇ ਜੋ ਗੁਰਦੇਉ ਜੋ ਗੁਰਦੇਉ ਤਾਂ ਛਾਪ ਰਛਾਈ ਜੋ ਗੁਰਦੇਉ ਸਹਜ ਨਿਕਸਾਈ ਔਰ ਸ਼ਬਦ ਦੇ ਅੰਤ ਵਿੱਚ ਫਿਰ ਫਰਮਾਉਂਦੇ ਹਨ ਬਿਰਗ ਬਿਨ ਗੁਰਦੇਉ ਅਵਰ ਨਹੀਂ ਜਾਈ ਨਾਮ ਦੇਉ ਗੁਰ ਕੀ ਸਰਣਾਈ ਭਗਤ ਨਾਮਦੇਵ ਜੀ ਦਾ ਕਹਿ ਰਹੇ ਹਨ ਕਿ ਗੁਰੂ ਦੀ ਕਿਰਪਾ ਨਾਲ ਦਿਹੁਰਾ ਫਿਰ ਗਿਆ ਗੁਰੂ ਦੀ ਕਿਰਪਾ ਨਾਲ ਮੇਰੀ ਛੱਪਰੀ ਬਣ ਗਈ ਭਾਵ ਗੁਰ ਪਰਮੇਸ਼ਰ ਸੋਇ ਭਾਵ ਪਰਮੇਸ਼ਰ ਨਹੀਂ ਨੇ ਫੇਰਿਆ ਅਤੇ ਛਪਰੀ ਬਣਾਈ ਪਰ ਕਾਮਰਡੀ ਸੋਇ ਦੇ ਮਾਲਕ ਇਹ ਰਹੇ ਹਨ ਕਿ ਸਤ ਸੰਗੀਆਂ ਨੇ ਛਪਰੀ ਬਣਾਈ ਨੂੰ ਕਿਸੇ ਦੀ ਸਹਾਇਤਾ ਲਈ ਜਨਮ ਨਹੀਂ ਲੈਣਾ ਪੈਂਦਾ ਬਲਕਿ ਪ੍ਰਗਟ ਹੁੰਦਾ ਹੈ ਇਸ ਤਰ੍ਹਾਂ ਪਹਿਰਲਾਦ ਨੇ ਲੋਹੇ ਦੇ ਲਾਲ ਕੀਤੇ ਥੰਮ ਵਿੱਚ ਦਿਸ ਪਿਆ ਸੀ ਕਾਲ ਪੈ ਕੋਪਿਓ ਮੂਹੇ ਬਤਾਓ ਜੋ ਤੋ ਹਿਰਾਖੇ ਪੀਤ ਪਤੰਬਰ ਤ੍ਰਿਪਵਨ ਥੰਬ ਮਾਹੇ ਹਰਪਖੇ ਹਰਨਾਖਸ ਜਿਨ ਨਖ ਨਖੇ ਵਿਦਾਰਿਓ ਸੁਰਨਰ ਕੀਏ ਸੁਨਾਥਾ ਕਹਿ ਨਾਨਕ ਦੇਉ ਹਮਨਰ ਹਰ ਧਿਆਵੇ RAM ਪਦਾਤਾ ਹਾਸ ਕੜਗ ਹਾਥ ਖੜਗ ਕਰਤਾ ਆਤ ਅਤ ਹਰ ਤੇਰਾ ਕਹਾ ਤੁਜ ਲੈਓ ਬਾਰ ਖਿਨਵੇਂ ਭੈਣ ਰੂਪ ਨਿਕਸਿਆ ਥਮ ਉਪਾੜ ਹਰਨਾਖਿ ਨਖੀ ਬਿਦਾਰਿਆ ਪਹਿਰਲਾਦ ਲੀਆ ਉਬਾਰ ਮੈਂ ਕੱਗਾ ਜੀ ਨੂੰ ਪੁੱਛਿਆ ਪਰਮੇਸ਼ਰ ਕੀ ਨਹੀਂ ਕਰ ਸਕਦਾ ਕੱਗਾ ਜੀ ਨੇ ਬੁੱਲ ਫਰਕੇ ਪਰ ਚੁੱਪ ਰਹੇ ਬੋਲੇ ਕੁਝ ਨਹੀਂ ਕਹਿਣਾ ਚਾਹੁੰਦੇ ਸਨ ਕਿ ਪਰਮੇਸ਼ਰ ਹੈ ਹੀ ਨਹੀਂ ਤਾਂ ਉਸਨੇ ਕਰਨਾ ਕੀ ਹੈ ਪਰ ਇਸ ਡਰੋਂ ਕਿ ਨਾਸਕਤਾ ਵਾਲੀ ਸੋਚ ਪ੍ਰਗਟ ਹੋ ਜਾਏਗੀ ਇਸ ਲਈ ਚੁੱਪ ਕਰ ਗਏ ਇਸ ਤੋਂ ਅੱਗੇ ਅੰਗ 17 ਦੇਰ ਥਾਂ ਵਿੱਚ ਕੱਗਾਈ ਦੱਸਦੇ ਹਨ ਕਿ ਸਤਸੰਗੀਆਂ ਨੇ ਕਿਹਾ ਕਿ ਜੇ ਕਹਿੰਦਾ ਧਰਤੀ ਟੇਢੀ ਕਰਦੀ ਏ ਮੈਂ ਕੱਗਾ ਜੀ ਨੂੰ ਪੁੱਛਿਆ ਕਿ ਇਸ ਕਿਸ ਵਿਆਕਰਣ ਨੂੰ ਮੁੱਖ ਰੱਖ ਕੇ ਅਰਥ ਕੀਤੇ ਹਨ ਉਤਮ ਪੁਰਖ ਇੱਕ ਵਚਨ ਨੂੰ ਅਨਪੁਰਖ ਬਹੁਵਚਨ ਕਿਸਰਾ ਬਣਾ ਦਿੱਤਾ ਕੱਗਾ ਜੀ ਦਾ ਕਹਿਣਾ ਸੀ ਕਿ ਵਿਆਕਰਣ ਬਣੀ ਨੂੰ 50 ਸਾਲ ਹੋ ਗਏ ਇਸ ਲਈ ਇਸ ਵਿੱਚ ਕੋਈ ਸੋਧਾਂ ਹੋ ਗਈਆਂ ਹਨ ਪਾਠਕਾ ਪਿੰਦਾ ਜਾਂ ਲਾ ਲੈਣ ਕਿ ਕੱਗਾ ਕਿਸ ਜ਼ਹਿਨੀयत ਦਾ ਮਾਲਕ ਹੈ ਲੋਕਾਂ ਨੂੰ ਆਖਦੇ ਹਨ ਵਿਆਕਰਣ ਅਨੁਸਾਰ ਅਰਥ ਕਰੋ ਤੇ ਆਪ ਹੀ ਕੀ ਕਰ ਰਹੇ ਹਨ ਸੋ ਸਹੀ ਅਰਥਨ ਪਰਮੇਸ਼ਰ ਨੇ ਕਿਹਾ ਕਿ ਕਹੇ ਤਾਂ ਧਰਤੀ ਜਿਸ ਤੇ ਨਾ ਜ਼ੁਲਮ ਹੋ ਰਿਹਾ ਹੈ ਉਲਟਾ ਦੇਵਾਂ ਜੇ ਕਹੇ ਤਾਂ ਹੇਠਲੀ ਉੱਪਰ ਕਰ ਦੇਵਾਂ ਕਹੇ ਤਾਂ ਮਰੀ ਗਊ ਜਿਵਾ ਦੇਵਾਂ ਤਾਂ ਕਿ ਸਭ ਨੂੰ ਪਤਾ ਚੱਲ ਜਾਏ ਕਿ ਨਾਮਦੇਵ ਦੇ ਰਾਮ ਦਾ ਬਲ ਕਿੰਨਾ ਹੈ ਇੱਥੇ ਇਹ ਵੀ ਦੱਸਣਾ ਯੋਗ ਰਹੇਗਾ ਕਿ ਸਾਰੀ ਵਰਤਾਲਾ ਪਰਮੇਸ਼ਰ ਤੇ ਨਾਮਦੇਵ ਜੀ ਇਸ ਵਿੱਚ ਅੰਤਰਾਤਮਿਕ ਗੁਪਤ ਹੋਈ ਹੈ ਜੋ ਕਿ ਹੋਰ ਕਿਸੇ ਨੂੰ ਨਹੀਂ ਸੁਣੀ ਜਿਸ ਨੂੰ ਗੁਰਬਾਣੀ ਨੇ ਕਿਹਾ ਭਗਤ ਸੰਗ ਪ੍ਰਭ ਗੋਸ਼ਟ ਕਰਤ ਜਿਸ ਤਰਾ ਤਨਾਸੀ ਰਾਗ ਵਿੱਚ ਅੰਗ 600 94 ਦੇ ਦਰਜ ਹੈ ਤੂੰ ਕੁੰਨ ਰੇ ਮੈ ਜੀ ਨਾਮਾ ਅੱਗੇ ਫਰਮਾਉਂਦੇ ਹਨ ਨਾਮਾ ਪ੍ਰਣਮੇ ਸੇਲਮ ਸੇਲ ਗਉ ਦੁਹਾਈ ਬਛਰਾ ਮੀਲ ਨਾਮਦੇਵ ਜੀ ਨੇ ਆਖਿਆ ਰਸੀ પા ਕੇ ਗਾਂਵ ਦੁੱਧ ਦੇ ਦੋਹੇ ਜਬ ਮਟਕੀ ਭਰੀ ਲੈ ਬਾਦਸ਼ਾਹ ਕੇ ਅੱਗੇ ਧਰੀ ਦੁੱਧ ਚੋਕ ਕੇ ਮਟਕੀ ਭਰ ਕੇ ਬਾਦਸ਼ਾਹ ਦੇ ਅੱਗੇ ਧਰ ਦਿੱਤੀ ਭਾਵ ਗੁਰਮੁਖਾਂ ਵੱਲੋਂ ਬਾਦਸ਼ਾਹ ਦੇ ਨਮੈਦਿਆਂ ਨਾਲ ਸਾਰੇ ਪੱਖ ਵਿਚਾਰਨ ਤੋਂ ਬਾਅਦ ਆਖਰ ਨਿਚੋੜ ਬਾਦਸ਼ਾਹ ਅੱਗੇ ਧਰ ਦਿੱਤਾ ਮਸਲਾ ਤਾਂ ਸਿਰਫ ਗਾਂ ਜਿੰਦਾ ਕਰਨ ਦਾ ਸੀ ਦੁੱਧ ਚੋਣ ਦੀ ਸ਼ਰਤ ਰੱਖੀ ਨਹੀਂ ਸੀ ਕੁਦਰਤ ਨਾਲ ਖਿਲਵਾੜ ਕਰਨਾ ਮਦਾਰੀਆ ਵਾਂਗ ਤਮਾਸ਼ੇ ਕਰਨੇ ਗੁਰਮੁਖ ਦਾ ਸੂਲ ਨਹੀਂ ਭਗਤ ਜਨ ਰਜਾ ਵਿੱਚ ਰਾਜੀ ਰਹਿੰਦੇ ਹੋਏ ਸਜ ਤੇ ਪਹਿਰਾ ਦਿੰਦੇ ਹਨ ਹੋਏ ਜ਼ੁਲਮ ਨਾਲ ਟਕਰਾ ਜਾਂਦੇ ਹਨ ਬਾਦਸ਼ਾਹ ਹੋ ਮਹਲ ਮੈਂ ਆਇਆ ਔਕਟ ਕੀ ਔਕਟ ਔਕਟ ਇਸ ਸਾਰੇ ਘਟਨਾਕਰਨ ਤੋਂ ਬਾਅਦ ਰਾਜਾ ਆਪਣੇ ਮਹਿਲ ਵਿੱਚ ਚਲਾ ਗਿਆ ਪਰ ਉਸ ਦਾ ਮਨ ਬਹੁਤ ਪਰੇਸ਼ਾਨ ਸੀ ਨੋਟ ਕਰਨ ਵਾਲੀ ਗੱਲ ਹੈ ਜਦੋਂ ਗਾਂਜਿੰਦਾ ਹੋ ਗਈ ਤਾਂ ਔਖਿਆਈ ਕਾਦੀ ਕੰਮ ਨਿਭੜ ਗਿਆ ਰੱਖੀ ਸ਼ਰਤ ਤੋਂ ਕੰਮ ਵੱਧ ਹੋ ਚੁੱਕਾ ਸੀ ਕਾਜੀ ਮੁਲਾ ਬੇਨਤੀ ਫਰਮਾਈ ਬਖਸ਼ੀ ਹਿੰਦੂ ਮੈਂ ਤੇਰੀ ਗਾਏ ਰਾਜੇ ਵੱਲੋਂ ਭੇਜੇ ਕਾਜੀ ਮੋਲਾਣੇ ਮੇਰੇ ਭਗਵਾਨ ਨਾਮਦੇਵ ਕੋਲ ਆਏ ਅਤੇ ਦਬੀ ਆਵਾਜ਼ ਨਾਲ ਆਖਣ ਲੱਗੇ ਭਗਤ ਜੀ ਸਾਡੇ ਕੋਲ ਜਿਆਤੀ ਹੋ ਗਈ ਰਾਜਾ ਭਗਵਾਨ ਮੁਹੰਮਦ ਬਿਨ ਤੁਗਲਕ ਵੀ ਮਹਿਸੂਸ ਕਰਦੇ ਹਨ ਅਸੀਂ ਵੀ ਤੁਹਾਡੀਆਂ ਗਊਆਂ ਹਾਂ ਸਾਨੂੰ ਬਖਸ਼ ਦਿਓ ਰਾਜਾ ਜੀ ਇਹ ਚਾਹੁੰਦੇ ਹਨ ਕਿ ਤੁਸੀਂ ਦੱਸੋ ਤੁਹਾਡੀ ਅਤੇ ਤੁਹਾਡੇ ਸਾਥੀਆਂ ਦੀ ਕੀ ਸੇਵਾ ਕਰ ਸਕਦੇ ਹਾਂ ਨੋਟ ਜਦੋਂ ਗਾਂ ਜੀਵਤ ਹੋ ਗਈ ਦੁੱਧ ਦੀ ਮਟਕੀ ਰਾਜੇ ਪੇਸ਼ ਕਰ ਦਿੱਤੀ ਗਈ ਤਾਂ ਬਾਦਸ਼ਾਹ ਨੂੰ ਵਿਪਤਾ ਕਾਦੀ ਜੇ ਕਰਾਮਾਤ ਰਹੀਂ ਨਾਮਦੇਵ ਜੀ ਗਊ ਜੀਵਤ ਕਰ ਸਕਦੇ ਹਨ ਮੋਈ ਗਾਂ ਤੋਂ ਦੁੱਧ ਚੋ ਸਕਦੇ ਹਨ ਤਾਂ ਕਰਾਮਾਤ ਦੁਆਰਾ ਜ਼ਲਮ ਬਾਦਸ਼ਾਹ ਨੂੰ ਵੀ ਖਤਮ ਕਿਉਂ ਨਾ ਕਰ ਦਿੱਤਾ ਕਾਜ਼ੀਆਂ ਬੁਲਾਣੇ ਨੂੰ ਸਜ਼ਾਈ ਦੇ ਦਿੰਦੇ ਇਹ ਗਊ ਜਵਾਲਣ ਦੇ ਨਾਮਦੇਵ ਜੀ ਕਿਤੇ ਕੋਈ ਮਹਾਨ ਬਣ ਗਏ ਮੁਸਲਮਾਨ ਬਾਦਸ਼ਾਹ ਗਾਂ ਜਿੰਦਾ ਕਿਉਂ ਕਰਨਾ ਚਾਹੁੰਦਾ ਸੀ ਬਾਦਸ਼ਾਹ ਦੇ ਡਰਨ ਦਾ ਅਸਲ ਕਾਰਨ ਸ਼ਬਦ ਵਿੱਚ ਲਾ ਕਹੇ ਤਾਂ ਧਰਨੇ ਕੋਡੀ ਕਰੂੰ ਕਹੇ ਤਾਂ ਲੈਕਰ ਉਪਰ ਧਰੂੰ ਇਹੋ ਜੇ ਰੂਪਰੇ ਸ਼ਬਦੋਂ ਸਪਸ਼ਟ ਹੋ ਜਾਂਦਾ ਹੈ ਕਿ ਧਰਤੀ ਕਿਸੇ ਦੇ ਆਖਿਆ ਉਲਟੀ ਨਹੀਂ ਹੋ ਜਾਂਦੀ ਅਸਲ ਵਿੱਚ ਲੋਕ ਪ੍ਰੇਮ ਨਾਲ ਸਿਆਣੇ ਰਹਿਬਰ ਦੀ ਅਗਵਾਈ ਵਿੱਚ ਬਗਾਵਤਾਂ ਕਰਦੇ ਹਨ ਰਾਜ ਪਲਟਾ ਵੀ ਲੈ ਆਉਂਦੇ ਹਨ ਜ਼ੁਲਮ ਦੀ ਜੜ ਪੁੱਟ ਦਿੰਦੇ ਹਨ ਜ਼ਾਲਮ ਹਾਕਮਾਂ ਮੌਤ ਦੇ ਘਾਟ ਤਾਰ ਦਿੰਦੇ ਹਨ ਸ਼ਬਦ ਅਰਥਾਂ ਨਾਲ ਜਿੱਥੇ ਗੱਲ ਸਪਸ਼ਟ ਨ ਹੋਵੇ ਉਥੇ ਪਾਵਰਥ ਕਰਨੇ ਪੈਂਦੇ ਹਨ ਨਾਮਾ ਕਹੇ ਸੁਨੋ ਬਾਦਸ਼ਾ ਇਹੋ ਕਿਛ ਪਤੀਏ ਮuje ਦਿਖਾਏ ਮੈਂ ਆਖਿਆ ਬਾਦਸ਼ਾ ਇਸ ਤਰ੍ਹਾਂ ਜਵਾਬੀ ਕਲਾਮੀ ਮਾਫੀ ਮੰਗਣ ਨਾਲ ਕੁਝ ਨਹੀਂ ਸਬਰਨਾ ਜੇ ਸੱਚਮੁੱਚ ਤੁਹਾਡੇ ਅੰਦਰ ਕੋਈ ਪਸਤਾਵਾ ਹੈ ਤਾਂ ਫਿਰ ਮੈਨੂੰ ਇਹ ਵਿਸ਼ਵਾਸ ਦਿਵਾਓ ਇਸ ਪਤੀਆ ਕਾ ਇਹ ਪ੍ਰਵਾਨ ਸਾਚ ਸੀਲ ਚੱਲੋ ਸੁਲਤਾਨ ਸੀਲ ਪਾਵਿਸ਼ਿਸ਼ਤਾਚਾਰ ਮਿੱਤਰਤਾ ਸ਼ਾਂਤੀ ਭਾਵ ਮਹਾਨਕੋਸ਼ ਪੰਨਾ 205 ਇਸ ਮਾਫੀਨਾਮੇ ਦਾ ਅਸਲ ਮਕਸਦ ਇਹ ਹੈ ਬਾਦਸ਼ਾਹ ਤੂੰ ਅੱਗੋਂ ਕਿਸੇ ਗਰੀਬ ਤੇ ਜ਼ੁਲਮ ਨਾ ਕਰੇ ਪਰ ਜਨ ਨੂੰ ਸੁਖੀ ਰੱਖੇ ਸੱਚਾਈ ਦੇ ਰਾਹ ਤੇ ਖੁੱਚਲੇ ਤੇ ਇਨਸਾਫ ਵਾਲਾ ਸੱਚਾ ਧਰਮੀ ਰਾਜ ਕਰੇ ਨਾਮ ਦਿਓ ਸਭ ਰਹਿਆ ਸਮਾਏ ਮਿਲ ਹਿੰਦੂ ਸਭ ਨਾਮੇ ਪਹਿ ਜਾਏ ਇਹ ਸ਼ਾਨਦਾਰ ਮਾਣ ਭਰੀ ਸਾਦੀ ਜਿੱਤ ਤੋਂ ਬਾਅਦ ਨਾਮਦੇਵ ਜੀ ਦੀ ਸ਼ੋਭਾ ਘਰ ਘਰ ਹੋਣ ਲੱਗੀ ਹਮਦਰਦ ਸਤਸੰਗੀ ਲੋਕ ਖੁਸ਼ੀ ਵਿੱਚ ਆਏ ਤੇ ਜਥਾ ਬਣਾ ਕੇ ਵੱਡੀ ਗਿਣਤੀ ਵਿੱਚ ਨਾਮਦੇਵ ਜੀ ਨੂੰ ਮਿਲੇ ਜੋਬ ਕੀ ਬਾਰ ਨਾ ਅੱਗੀ ਜੋ ਅਬ ਕੀ ਬਾਰ ਜੀਵੇ ਗਾਏ ਤਾਂ ਨਾਮਦੇਵ ਕਾ ਪਤੀਆ ਜਾਏ ਪਤੀਆ ਪ੍ਰਤਾਵਾ ਇਮਤਿਹਾਨ ਵਿਸ਼ਵਾਸ ਪੰਨਾ ਮਹਾਨ ਕੋਸ਼ 739 ਸਾਰੇ ਸਤਸੰਗੀ ਭਰਾ ਕੇ ਵਧਾਈ ਦੇਣ ਲੱਗੇ ਅਤੇ ਆਖਿਆ ਭਗਤ ਜੀ बड़ा ਵੱਡਾ ਇਮਤਿਹਾਨ ਸੀ ਤੁਹਾਡਾ ਜਿਹੜੀ ਤੁਸੀਂ ਦਲੇਰੀ ਤੇ ਸਿਆਣਪ ਨਾ ਦਿਖਾਉਂਦੇ ਤਾਂ ਤੁਹਾਡੇ ਸਮਿੱਤ ਸਾਨੂੰ ਸਾਰਿਆਂ ਨੂੰ ਵੀ ਜ਼ਲਮ ਦੇ ਰੋਲ ਰੋਲ ਮਾਰਨਾ ਸੀ ਤੁਹਾਡੀ ਨੀਕੀ ਪਰਪਕਾਰ ਕਾਰਨ ਜਨ ਸਮੂਹ ਤੇ ਵੀ ਤੁਹਾਡਾ ਸਾਥ ਦਿੱਤਾ ਇਸੇ ਲਈ ਸਾਂਝੇ ਰੋ ਅਤੇ ਸੱਚ ਨੂੰ ਦਬਾ ਨਹੀਂ ਸਕਿਆ ਹਨ ਜੋ ਅਜੇ ਵੀ ਇਸ ਸਜ ਤੋਂ ਕੋਹਾਂ ਦੂਰ ਹਨ ਤੇ ਨਰਕਮਈ ਜ਼ਿੰਦਗੀ ਵਿਉਂ ਜਿਉਂਦੇ ਹਨ। ਨਾਮੇ ਕੀ ਕੀਰਤ ਰਹੀ ਸੰਸਾਰ ਭਗਤ ਜਨਾਂ ਨੇ ਉਧਰਿਆ ਪਾਰ। ਇਸ ਗਣ ਤੇ ਦਲੇਰੀ ਕਰਨ ਨਾਮਦੇਵ ਜੀ ਦੀ ਵਡਿਆਈ ਘਰ ਘਰ ਹੋਣ ਲੱਗ ਪਈ। ਲੋਕ ਤਨਨਾਮਦੇਵ ਤਨਨਾਮਦੇਵ ਆਖਣ ਲੱਗੇ। ਕਿਉਂਕਿ ਨਾਮਦੇਵ ਭਗਤ ਨੂੰ ਨਾਲ ਲੈ ਕੇ ਸੰਸਾਰਕ ਕਲੇਸ਼ ਤੋਂ ਪਾਰ ਹੋ ਗਿਆ ਸੀ। ਸਗਲ ਕਲੇਸ਼ ਨਿੰਦਕ ਪਿਆ ਖੇਦ ਨਾਮੇ ਨਰਾਇਣ ਨਾਹੀ ਪੇਦ। ਕੇਦ ਭਾਵ ਸ਼ੋਕ ਕਬਰਾਹਟ ਮਹਾਨਕੋਸ਼ ਪੰਨਾ 378 ਨਾਮਦੇਵ ਜੀ ਦੇ ਫਿਰ ਬਚਣ ਤੇ ਨਿੰਦਕਾਂ ਬ੍ਰਾਹਮਣਾ ਕਾਜ਼ੀਆਂ ਨੂੰ ਸਾਰੇ ਕਲੇਸ਼ ਤੇ ਕਲੇਸ਼ ਚੋ ਸ਼ੋਕ ਕਬਰਾਹਟ ਪੈਦਾ ਹੋਈ ਇਹਨਾਂ ਨੂੰ ਮੂਹ ਦੀ ਖਾਣੀ ਪਈ ਨਾਮਦੇਵ ਤੇ ਨਾਰਾਇਣ ਰੱਬ ਵਿੱਚ ਕੋਈ ਅੰਤਰ ਨਹੀਂ ਹੈ ਨੋਟ एक ਫਰਕ ਇਹ ਸਮਝ ਲੈਣਾ ਚਾਹੀਦਾ ਹੈ ਅੱਜ ਖੌਤੀ ਸਾਧਾ ਦੀ ਗੰਦੀ ਜ਼ਿੰਦਗੀ ਦੇ ਜਦੋਂ ਭਾਂਡੇ ਭਜਦੇ ਹਨ ਤਾਂ ਭਰਮ ਮਾਰੇ ਅਗਿਆਨੀ ਲੋਕ ਇੰਨਾ ਸਾਧੋਂ ਦੇ ਮਗਰ ਵੀ ਸ਼ਕਤੀ ਪ੍ਰਦਰਸ਼ਨ ਕਰਦੇ ਹਨ ਤੇ ਸਰਕਾਰ ਨੂੰ ਕਾਰਵਾਈ ਤੋਂ ਰੋਕਦੇ ਹਨ ਤੇ ਆਪਣਾ ਧਾਰਮਿਕ ਆਰਥਿਕ ਸ਼ੇਖ ਸ਼ੋਸ਼ਣ ਕਰਵਾਉਂਦੇ ਹਨ ਨਾਮਦੇਵ ਜੀ ਤੇ ਕਬੀਰ ਜੀ ਇਨਾ ਖੌਤੀ ਧਰਮੀਆਂ ਨੂੰ ਪਾਉਂਦਾ ਨਹੀਂ ਸੀ ਗੁਰੂ ਸਾਹਿਬਾਨ ਨਾਲ ਇਸੇ ਲੁੱਟਾ ਖਾਣੀ ਚੰਦਾਲ ਚੌਕੜੀ ਨੇ ਪਾਰੀ ਜ਼ੁਲਮ ਕੀਤੇ ਗੁਰੂ ਸਾਹਿਬਾਨ ਤੇ ਭਗਤ ਸਹਿਬਾਨ ਦੀ ਸੋਚ ਜੀਵਨ ਦੇ ਪਰਪਕਾਰ ਨੂੰ ਸਾਹਮਣੇ ਰੱਖ ਕੇ ਸਭ ਤੋਂ ਵੱਧ ਗਰੀਬਾਂ ਨੇ ਸਾਥ ਦਿੱਤਾ ਅਤੇ ਸਮੇਂ-ਸਮੇਂ ਹਕੂਮਤ ਦੇ ਲੁੱਟੋਆਂ ਦੇ ਦੰਦ ਖੱਟੇ ਕੀਤੇ ਗੁਰਬਾਣੀ ਤੇ ਇਤਿਹਾਸ ਗੁਰੂ ਸਾਹਿਬਾਨ ਅਤੇ ਭਗਤ ਸਹਿਬਾਨ ਦੇ ਪਵਿੱਤਰ ਜੀਵਨ ਦੇ ਸਾਖਸ਼ਾਤ ਗਵਾਹ ਹਨ ਪਰ ਅੱਜ ਦੇ ਇਨ੍ਹਾਂ ਠੱਗਾਂ ਪਿੱਛੇ ਕੀਤੇ ਪ੍ਰਦਰਸ਼ਨ ਕਿੰਨਾ ਬੇੜਾ ਗਰਖ ਕਰ ਰਹੇ ਹਨ ਇਸ ਦਾ ਪਤਾ ਉਦੋਂ ਲੱਗੂ ਜਦੋਂ ਇਨਕਲਾਬੀ ਸੋਚ ਮਾਰ ਕੇ ਤਬਾਹ ਕਰ ਦੇਣਗੇ ਉਦੋਂ ਰੋਣ ਤੋਂ ਸਵਾਹ ਹੋਰ ਕੁਝ ਨਹੀਂ ਹੁੰਦਾ ਜਾਂ ਪੁੱਛੋ ਉਹਨਾਂ ਨੂੰ ਜਿਨ੍ਹਾਂ ਨਾਲ ਬੀਤੀ ਜਾਂ ਪੜੋ ਮੌਜੂਦਾ ਹਾਲਤਾਂ ਨੂੰ ਕਿੰਨੇ ਸਾਧ ਸੰਤ ਸਮਾਜ ਦੀ ਗੰਦ ਖਿਲਾਰ ਰਹੇ ਹਨ ਸਿੱਖੀ ਬੇੜੇ ਨੂੰ ਵੀ ਲੈ ਡੁੱਬਣ ਲਈ ਤਿਆਰ ਹਨ ਪੰਜਾਬ ਵਿਦਿਆਜ ਤਰਾਸ ਦੀ ਅਖੌਤੀ ਸੰਤਾ ਜਥੇਦਾਰਾਂ ਆਗੂਆਂ ਦਾ ਹਿੰਦੀਜਾ ਹੈ ਕਈ ਤਾਂ ਸੰਜਨ ਲੱਗ ਪਏ ਹਨ ਕਿ ਕਈ ਥੋੜੇ ਸਮੇਂ ਵਿੱਚ ਸਮਝ ਜਾਣਗੇ ਸਾਰੰਸ਼ ਇਸ ਸ਼ਬਦ ਦੀ ਆਖਰੀ ਬੰਤਰ ਤੋਂ ਉਪਰ ਨਜ਼ਰੇ ਵਿਖਿਆ ਜਿਹਾ ਪ੍ਰਤੀਤ ਹੁੰਦਾ ਹੈ ਕਿ ਪ੍ਰਮਾਤਮਾ ਸਰਵ ਸ਼ਕਤੀਮਾਨ ਹੈ ਇੱਕ ਨਿੱਕੇ ਜਿਹੇ ਪੰਛੀ ਤੇ ਸਵਾਰੀ ਕਰਦਿਆਂ ਨਾਮਦੇਵ ਜੀ ਦੀ ਸਹਾਇਤਾ ਵਾਸਤੇ ਆਣ ਪੁਜਾ ਉਸ ਦੀ ਸਹਾਇਤਾ ਨਾਲ ਨਾਮਦੇਵ ਜੀ ਨੇ ਗਊ ਜੀਵਤ ਕਰ ਦਿੱਤੀ ਬਲਕਿ ਦੁੱਧ ਚੋ ਕੇ ਰਾਜੇ ਅੱਗੇ ਰੱਖਿਆ ਪਰ ਕੀ ਨਾਮਦੇਵ ਜੀ ਅਜਿਹੇ ਰੱਬ ਦੇ ਪੁਜਾਰੀ ਸਨ ਕਿ ਗੁਰਬਾਣੀ ਕਰਮਾਤਾਂ ਵਿੱਚ ਵਿਸ਼ਵਾਸ ਰੱਖਦੀ ਹੈ ਗੁਰੂ ਸਾਹਿਬਾਨ ਨੇ ਇਹ ਕਿ ਉਹਨਾਂ ਨੇ ਕਰਾਮਾਤਾਂ ਮੁਸ਼ਲਾਂ ਤੇ ਫਤਿਹ ਪਾਈ ਸਿੱਖ ਦਾ ਰਬ ਇੱਕ ਓੰਕਾਰ ਸਰੂਪ ਵਾਲਾ ਹੈ ਉਹ ਜਨਮ ਵਰਨ ਤੋਂ ਰਹਿਤ ਹੈ ਓ ਕਾਲ ਮੂਰਤ ਹੈ ਅਜੂਨੀ ਹੈ ਸੈਭੰਗ ਹੈ ਸੰਕਟ ਸੰਕਟ ਨਹੀਂ ਪਰੈ ਜੋਨ ਨਹੀਂ ਨਾਮ ਨਰੰਜਨ ਜਾ ਕਬੀਰ ਕੋ ਸਾਮੀਐ ਸੋ ਠਾਕੁਰ ਜਾ ਕੇ ਮਾਈ ਨਾ ਬਾਪੂ ਸਤਗੁਰੂ ਜੀ ਜਪ ਬਾਣੀ ਵਿੱਚ ਫਰਮਾਨ ਕਰਦੇ ਹਨ ਗੁਰੂ ਜੀ ਨੇ ਅੱਗੇ ਹੀ ਸਵਾਲ ਆਇਆ ਉਹਨਾਂ ਨੇ ਕਰਾਮਾਤ ਤੋਂ ਇਨਕਾਰ ਕੀਤਾ ਗੁਰੂ ਤੇਗ ਬਹਾਦਰ ਜੀ ਨੂੰ ਕਰਾਮਾਤ ਜਾਂ ਮੌਤ ਕਬੂਲਣ ਲਈ ਕਿਹਾ ਉਹਨਾਂ ਕੀਤਾ ਦਸਵੇਂ ਗੁਰੂ ਜੀ ਦੇ ਉੱਤੇ ਕਿੰਨੀਆਂ ਵੱਡੀਆਂ ਮੁਸੀਬਤਾਂ ਆਈਆਂ ਕਰਾਮਾਤ ਨਾਲ ਬਚ ਜਾਂਦੇ ਕਰਮਾਤ ਨਾ ਦੀ ਕੋਈ ਚੀਜ਼ ਹੋਵੇ ਤਾਂ ਹੋ ਵੀ ਸਕਦੀ ਹੈ ਜਦੋਂ ਹੈ ਹੀ ਕੋਈ ਨਹੀਂ ਤਾਂ ਕੀਤਾ ਕੀ ਜਾਵੇ ਸਾਰਾ ਸਿੱਖ ਇਤਿਹਾਸ ਲਾਸਾਨੀ ਬਹਾਦਰੀ ਵਾਲੀਆਂ ਘਟਨਾਵਾਂ ਨਾਲ ਭਰਿਆ ਪਿਆ ਹੈ ਸਿੰਘਣੀਆਂ ਪਚੰਗੀਆਂ ਨੇਕਾਂ ਤਸੀਹੇ ਚੱਲੇ ਮੌਤ ਪ੍ਰਵਾਨ ਕੀਤੀ ਪਰ ਚੁਕੇ ਨਹੀਂ ਸਦਕ ਤੇ ਅੜੇ ਰਹਿਣਾ ਹੀ ਅਸਲ ਕਰਾਮਾਤ ਹੈ ਭਾਰਤ ਵਿੱਚ ਲਗਭਗ 50 ਲੱਖ ਵੇਲੇੜ ਸਾਧ ਕਰਮਾਤੀ ਹੁਣ ਦਾ ਦਾਵਾ ਕਰਦੇ ਹਨ ਪਰ ਇਹਨਾਂ ਨੇ ਲਟੇਰੀਆਂ ਦੀ ਦੇਸ਼ ਦੀ ਆਜ਼ਾਦੀ ਵਿੱਚ ਕੋਈ ਯੋਗਦਾਨ ਨਹੀਂ ਪਾਇਆ ਦੇਸ਼ ਦੀ ਜਨਤਾ ਦਾ ਕਰਮਾਤਾਂ ਨਾਲ ਇਹਨਾਂ ਕੁਝ ਨਹੀਂ ਸਵਾਰਿਆ ਸਗੋਂ ਰੋਟੀ ਕੱਪੜਾ ਵੀ ਦੂਜਿਆਂ ਤੋਂ ਲੈ ਕੇ ਵਰਤਦੇ ਕਰਮਾਤਾਂ ਨਾਲ ਕੁਝ ਬਣ ਨੇ ਬਾਬਰ ਦੇ ਹਮਲੇ ਦੀ ਖਬਰ گاਉਂ ਦੇ ਕੇ ਆਖਿਆ ਸੀ ਮੁਕਾਬਲਾ ਕਰਨ ਲਈ ਤਿਆਰ ਰਹੋ ਇਹਨਾਂ ਪਠਾਣਾਂ ਨੇ ਠੋਕੇ ਆਖਿਆ ਸੀ ਸਾਡੇ ਕੋਲ ਵੱਡੇ ਵੱਡੇ ਪੀਰ ਫਕੀਰ ਹਨ ਜਾਦੂ ਟੋਣੇ ਮੰਤਰ ਕਰਨਗੇ ਮੁਗਲ ਬਾਬਰ ਦੀ ਫੌਜ ਅੰਨੀ ਹੋ ਜਾਵੇਗੀ ਭੱਜ ਜਾਵੇਗੀ ਫਿਰ ਜੋ ਹਾਲਾਤ ਇਹਨਾਂ ਦੀ ਹੋਈ ਉਹ ਗੁਰੂ ਨਾਨਕ ਦੇਵ ਜੀ ਨੇ ਬਾਣੀ ਨਹੀਂ ਸਾਨੂੰ ਉਹ ਸਮਝਾਈ ਹੈ ਤਾਂ ਕਿ ਕਰਾਮਾਤਾਂ ਨਾਲ ਕੰਮ ਰਾਸ ਕਰਾਉਣ ਦਾ ਭਰਮ ਨਿਕਲ ਜਾਏ ਕੋਟੀ ਹੂ ਪੀਰ ਵਰਜ ਰਹਾਏ ਜਾਂ ਮੀਰ ਸੁਣਿਆ ਧਾਇਆ ਖਾਨ ਮਕਾਮ ਜਲੇ ਬਜ ਮੰਦਰ ਮੁਛ ਮੁਛ ਕੋਇ ਰੁਲਾਇ ਕੋਈ ਮੁਗਲ ਨਾ ਹੋਆ ਅੰਦਾ ਕਿਨੇ ਨਾ ਪਰਚਾ ਲਾਇਆ ਰਾਜਨੀਤੀ ਪੈਸਾ ਤੇ ਗਿਆਨ ਅਜੇ ਸ਼ਕਤੀਸ਼ਾਲੀ ਹਥਿਆਰ ਹਨ ਜਿਨ੍ਹਾਂ ਅੱਗੇ ਹਰ ਐਰਾ ਗੈਰਾ ਝੁਕ ਜਾਂਦਾ ਹੈ ਪਰ ਪ੍ਰਭੂ ਪਿਆਰ ਵਾਲੇ ਮਰਜੀਵੜੇ ਸਤਿਗੁਰੂ ਜੀ ਵੱਲੋਂ ভরਸਾ ਸਿੱਖ ਭਗਤ ਜਨਮ ਦਾ ਮੂੰਹ ਤੋੜ ਜਵਾਬ ਦੇ ਸਕਦੇ ਹਨ ਗੰਗਾ ਜਮਨਾ ਉਲਟੀਆਂ ਵਗ ਪੈਣ ਬੇਸ਼ੱਕ ਪਰ ਜਨ ਪਰਵਕਾਰੀ ਆਏ ਆਪਣੇ ਸੂਲ ਤੋਂ ਪੈਰ ਪਛਾਣ ਨਹੀਂ ਹਟਾਉਂਦੇ ਉਹਨਾਂ ਦੀ ਬਿਰਤੀ ਹੁੰਦੀ ਹੈ ਕਿ ਮਨ ਨਾ ਤਨ ਕਾਹੇ ਕੋ ਡਰਾਈ ਚਰਨ ਕਮਲ ਚਿਤ ਰਹੇ ਗੁਰਬਾਣੀ ਦੇ ਇਨਕਲਾਬੀ ਤਤ ਨੂੰ ਖਤਮ ਕਰਕੇ ਆਮ ਲੇਖਕ ਪ੍ਰਚਾਰਕਾਂ ਸੰਤਾਂ ਵੱਲੋਂ ਸਿੱਖ ਸਮਾਏ ਨੂੰ ਕਰਾਮਾਤ ਦੇ ਚੱਕਰ ਵਿੱਚ ਉਲਝਾ ਕੇ ਜਿਹੇ ਕਰਾਹੇ ਗਿਆ ਹੈ ਕਿ ਵਾਪਸ ਮੁਰਨਾ ਸੰਭਵ ਹੋਇਆ ਪਿਆ ਹੈ ਗੈਬੀ ਸ਼ਕਤੀਆਂ ਦੀ ਝੂਠੀ ਟੀਕ ਕਾਰ ਤੇ ਡਰਪੋਕ ਲੋਕ ਰੱਖਦੇ ਹਨ ਉਹ ਖੁਦ ਵੀ ਬਰਬਾਦ ਹੁੰਦੇ ਹਨ ਤੇ ਆਪਣੇ ਸੰਗੀ ਸਾਥੀਆਂ ਨੂੰ ਵੀ ਗਲਤ ਸਿੱਖਿਆ ਦੁਆਰਾ ਕੁਰਾਹੇ ਪਾ ਕੇ ਮਰਵਾ ਦਿੰਦੇ ਹਨ। ਬਾਬਰ, ਜਹਾਂਗੀਰ, ਸ਼ਾਹ ਜਹਾਂ ਤੇ ਔਰੰਗਜ਼ੇ ਬਹੁਤ ਜ਼ਾਲਮ ਸਨ। ਸਤਗੁਰੂ ਸਾਹਿਬਾਨ ਬਹੁਤ ਸਿਆਣੇ ਸਨ ਪਰ ਕੀ ਇਹ ਜਾਵਰ ਰਾਜੇ ਰਣ ਪੀਣੇ ਰਣ ਪ੍ਰਤ ਪੀਣੇ ਜਰਨੈਲ ਖਤਮ ਕੀਤੇ ਜਾ ਸਕੇ। 100 ਸਾਲ ਤੱਕ ਸਿੱਖਾਂ ਨੇ ਇੱਕ ਸੰਕਟ ਦਾ ਸਮਾਂ ਰਹਾ, ਸਿਰਾਂ ਦੇ ਮੁੱਲ ਪਏ, ਸਰਬਨਾਸ਼ ਦੀ ਕਗਾਰ ਤੇ ਪੁੱਜ ਗਏ। ਤਦੋਂ ਬਹੁਤ ਨਾਮ ਰਸੀਏ ਭਜਨੀਕ ਸਿੱਖ ਸਨ। ਕੀ ਕਰਾਮਾਤਰਾਇ ਸਿੱਖਾਂ ਦੇ ਜ਼ੁਲਮ ਹੁਣ ਰੁਕਿਆ ਕੀ ਇਹ ਸੰਭਵ ਹੈ ਅੱਜ ਦੀ ਅਣਗਿਣਤ ਅਖੌਤੀ ਸੰਤ ਬ੍ਰਹਮ ਗਿਆਨੀ ਤੁਰੇ ਫਿਰਦੇ ਨਜ਼ਰ ਆਉਂਦੇ ਹਨ ਪਰ ਸਿੱਖ ਪੰਥ ਜਾਂ ਮਨੁੱਖੀ ਸਮਾਜ ਦਾ ਇਹਨਾਂ ਕੋਈ ਸਵਾਰਿਆ ਹੈ ਹੁਣ ਇਹਨਾਂ ਦੀ ਕਰਾਮਾਤਾਂ ਖੁੰਡੀਆਂ ਹੋ ਚੁੱਕੀਆਂ ਹਨ ਕਰਾਮਾਤਾਂ ਦੇ ਟੇਕ ਰੱਖਣ ਵਾਲਿਆਂ ਦੇ ਜਾਨ ਮਾਲ ਦੀ ਤਵਾਹੀ ਕਰਉਣ ਤੋਂ ਬਿਨਾ ਹੋਰ ਕੁਝ ਹਾਸਲ ਕੀਤਾ ਹੋਵੇ ਤਾਂ ਦੱਸੋ ਗਵਾਹੀ ਬਾਬਰ ਦੇ ਹਮਲੇ ਦੀ ਗੁਰੂ ਨਾਨਕ ਦੇ ਗਏ ਹਨ ਗੁਰੂ ਨਾਨਕ ਸਾਹਿਬ ਜੀ ਕੋਲ ਗੋਬਿੰਦ ਘਰੜ ਤੇ ਸਵਾਰ ਹੋ ਕੇ ਨਹੀਂ ਆਇਆ ਪੰਜਵੇਂ ਪਾਤਸ਼ਾਹ ਛੇਵੇਂ ਪਾਤਸ਼ਾਹ ਨੌਵੇਂ ਪਾਤਸ਼ਾਹ ਦਸਵੇਂ ਪਾਤਸ਼ਾਹ ਜੀ ਕੋਲ ਕਦੀ ਗੋਬਿੰਦ ਘਰੜ ਉੱਤੇ ਸਵਾਰ ਹੋ ਕੇ ਨਹੀਂ ਆਇਆ ਕਿ ਇਹਨਾਂ ਦੀ ਘੱਟ ਸ਼ਕਤੀ ਸੀ ਇਹ ਰੱਬ ਦੇ ਪਿਆਰੇ ਨਹੀਂ ਸਨ ਸਤਿਗੁਰੂ ਜੀ ਨੇ ਸਪਸ਼ਟ ਜੋ ਸਾਨੂੰ ਸਿੱਖਿਆ ਦਿੱਤੀ ਹੈ ਉਹ ਹੈ ਮੀਰੀ ਤੇ ਪੀਰੀ ਭਗਤੀ ਤੇ ਸ਼ਕਤੀ ਸੰਤ ਤੇ ਸਿਪਾਈ ਬਾਣੀ ਤੇ ਬਾਣਾ ਸ਼ਸਤਰ ਤੇ ਸ਼ਾਸਤਰ ਤੇ ਸ਼ਸਤਰ ਦਸ ਮੀਲ ਬਖਸ਼ਿਸ਼ ਕੀਤਾ ਹੈ ਸਤੂਜੀ ਨੇ ਇੱਕ ਕਾਲ ਦੇ ਪੁਜਾਰੀ ਬਣਾ ਕੇ ਇਕਤਾ ਦੇ ਸੂਤਰ ਵਿੱਚ ਪਰੋਇਆ ਸੀ ਕਿਛ ਦੀ ਬਦੌਲਤ ਸਿੱਖ ਸਭ ਵਰਗ ਤਾਂ ਤਾਕਤਾਂ ਤਖਤਾਂ ਦੇ ਮਾਲਕ ਬਣ ਗਏ ਜਦੋਂ ਤੋਂ ਬ੍ਰਾਹਮਣੀ ਤਾਂ ਕਰਾਮਾਤਾਂ ਦੀ țeਗ ਰੱਖਣ ਲੱਗੇ ਤਾਂ ਹੋਰ ਨਿਵਾਣਾ ਵਿੱਚ ਡੂੰਗੀ ਦਦਲ ਵਿੱਚ ਤਰਦੇ ਜਾ ਰਹੇ ਹਾਂ ਜੇ ਨਾਮਦੇਵ ਜੀ ਵਕਤ ਉਸ ਰੱਖਿਆ ਵਾਸਤੇ ਭਗਵਾਨ ਗੁਰੂ ਤੇ ਸਵਾਰ ਹੋ ਕੇ ਆਪ ਪੂਜਾ ਸੀ ਕੀ ਅੱਜ ਇੱਕ ਅਜਿਹਾ ਸਿੱਖ ਸਾਧ ਬ੍ਰਹਮ ਗਿਆਨੀ ਜੋ ਖਾਲਸਾ ਪੰਥ ਰੂਪੀ ਬੜੇ ਨੂੰ ਡੁੱਬਣੋਂ ਬਚਾ ਲਵੇ ਜਾਂ ਤਾਂ नहीं, ਹੀ ਕੋਈ ਨਹੀਂ ਜਾਂ ਭਲਾ ਕਰਨਾ ਹੀ ਨਹੀਂ ਚਾਹੁੰਦੇ ਦੋਹਾਂ ਗੱਲਾਂ ਵਿੱਚ ਇੱਕ ਤਾਂ ਸੱਚ ਜਰੂਰ ਹੈ ਵੀਰੋ ਪੈਣੋ ਵੇਲਾ ਜਾਗਣਦਾ ਹੈ ਗੁਰਬਾਣੀ ਨੂੰ ਸਮਝੁੰਦਾ ਹੈ ਜੀਵਨ ਨੂੰ ਗੁਰੂ ਆਸ਼ ਅਨਸਾਰ ਗੁਣਵਾਨ ਬਣਾਉਂਦਾ ਹੈ ਕੱਗਾ ਦੇ ਵਿਚਾਰਾਂ ਦਾ ਸਪਸ਼ਟੀਕਰਨ ਪਰਮੇਸ਼ਰ ਜੰਮਦਾ ਮਰਦਾ ਨਹੀਂ ਪਰ ਸਭ ਜਗ੍ਹਾ ਵਿਆਪਕ ਹੈ ਤੇ ਆਪਣੇ ਭਗਤਾਂ ਦੀ ਰੱਖਿਆ ਲਈ ਪ੍ਰਗਟ ਹੁੰਦਾ ਹੈ ਜਿਸ ਤਰ੍ਹਾਂ ਕਿ ਪ੍ਰਹਿਲਾਦ ਦੀ ਰੱਖਿਆ ਕੀਤੀ ਬਾਣੀ ਗਵਾਹੀ ਦੇ ਰਹੀ ਜਿਉਂਦੀ ਹੁਣ ਪਿਛੋ ਨਾਮਦੇਵ ਜੀ ਨੂੰ ਰਿਹਾ ਕਰ ਦਿੱਤਾ ਗਿਆ ਬਹੁਤ ਸਾਰੇ ਹਿੰਦੂ ਇਕੱਠੇ ਹੋ ਕੇ ਨਾਮਦੇਵ ਜੀ ਕੋਲ ਗਏ ਨਾਮਦੇਵ ਜੀ ਦੀ ਪਰਮੇਸ਼ਰ ਵੱਲੋਂ ਇੱਜ਼ਤ ਰੱਖਣ ਦੇ ਵਧਾਈ ਦਿੱਤੀ ਅਤੇ ਨਾਲ ਹੀ ਕਿਹਾ ਸੀ ਕਿ ਇਸ ਬਾਰ ਗਉ ਜਿਉਂਦੀ ਨਾ ਹੁੰਦੀ ਤਾਂ ਨਾ ਤਾਂ ਲੋਕਾਂ ਦਾ ਰੱਬ ਕੋਲ ਭਰੋਸਾ ਰਹਿਣਾ ਸੀ ਤੇ ਨਾ ਹੀ ਨਾਮਦੇਵ ਜੀ ਤੇ ਕਿਸੇ ਦੀ ਸ਼ਰਧਾ ਪ੍ਰਤੀਤ ਹੋਣੀ ਸੀ ਅਚਲ ਵਟਾਲੇ ਵਿਖੇ ਸਿੱਖ ਸਿੱਧ ਜੋਗੀਆਂ ਨੇ ਗੁੱਸੇ ਨਾਲ ਭਰ ਕੇ ਗੁਰੂ ਨਾਨਕ ਸਾਹਿਬ ਜੀ ਨੂੰ ਇਹ ਗੱਲ ਕਹੀ ਸੀ ਕਿ ਤੁਸੀਂ ਕਰਾਮਾਤ ਦਿਖਾਓ ਦੇਰੀ ਕਿਉਂ ਲਾਈ ਹੈ ਜੋ ਜਵਾਬ ਗੁਰੂ ਨਾਨਕ ਸਾਹਿਬ ਜੀ ਨੂੰ ਦਿੱਤਾ ਭਾਈ ਗੁਰਦਾਸ ਜੀ ਨੇ ਲਿਖਿਆ ਹੈ ਸਿੱਧ ਬੋਲ ਸੁਣ ਨਾਨਕਾ ਤੁਹੇ ਨੂੰ ਕਰਾਮਾਤ ਦਿਖਾਈ ਕੁਝ ਦਿਖਾਏ ਅਸਾਂ ਨੂੰ ਤੋਹੇ ਕਿਉਂ ਟਲ ਆਵੇ ਹੀ ਲਾਈ ਬਾਬਾ ਬੋਲੇ ਨਾਥ ਜੀ ਅਸਾਂ ਤੇ ਵੇਖਣ ਜੋ ਅਸਾਂ ਯੋਗ ਵਸਤ ਕਰਾਮਾਤ ਨਾਕਾਈ ਗੁਰ ਸੰਗਤ ਬਾਣੀ ਬਿਨਾ ਦੂਜੀ ਓਟ ਨਹੀਂ ਹੈ ਰਾਈ ਕਾਮਰਿਡੀ ਸਿੱਖਾਂ ਤੇ ਮਿਸ਼ਨਰੀ ਕਾਲਜ ਵਾਲਿਆਂ ਨੇ ਇਨ੍ਹਾਂ ਤੁਕਾਂ ਦੇ ਭਾਵ ਅਰਥਾਂ ਨੂੰ ਦਰ ਕਰਕੇ ਜੋ ਖਲਵਾੜ ਗੁਰੂ ਆਸ਼ੀਰਵਾਲ ਕੀਤਾ ਹੈ ਹਰ ਕੋਈ ਹੋਰ ਕੋਈ ਕਰ ਨਹੀਂ ਸਕਦਾ ਕਿਉਂਕਿ ਸਾਇੰਸ ਕਰਮਾਤਾਂ ਨੂੰ ਮੰਨਦੀ ਨੂੰ ਮੰਨਦੀ ਨਹੀਂ ਇਸ ਲਈ ਇਹਨਾਂ ਨੇ ਮੰਨਣਾ ਨਹੀਂ ਇਸ ਕੁੰਡੀ ਨੂੰ ਖੋਲਣਾ ਬਹੁਤ ਜ਼ਰੂਰੀ ਹੈ ਪਹਿਲਾਂ ਤੇ ਇਹ ਕਹਿੰਦੇ ਹਨ ਸਿੱਧੀ ਸਿੱਧੀ ਕੋਈ ਚੀਜ਼ ਹੈ ਹੀ ਨਹੀਂ ਪਰ ਗੁਰਬਾਣੀ ਦੱਸ ਰਹੀ ਹੈ ਨਵ ਨਿਧਿ 18 ਸਿੱਧੀ ਪਿੱਛੇ ਲੱਗੀਆਂ ਸਰਨ ਜੋ ਹਰ ਹਿਰਦੈ ਸਦਾ ਵਸਾਏ ਅਗਲੇ ਸ਼ਬਦ ਅੱਗੇ ਸ਼ਬਦ ਵਿੱਚ ਸੁਣਾਉਂਦੇ ਹਨ ਨਵ ਨਿਧ ਰਿੱਧ ਸਿੱਧ ਹਰ ਲਗ ਰਹੀ ਜਨ ਪਾਈ ਰਿੱਧ ਨਿਦ ਰਿੰਦ ਭਗਤਾਂ ਚਰਣੀ ਲੱਗੀ ਗੁਰਕੇ ਸਹਿਜ ਸੁਭਾਈ ਸੋ ਸਹੀ ਹੋਇਆ ਕਿ ਰਿੱਧੀਆਂ ਸਿਧੀਆਂ ਹਨ ਅਤੇ ਪਰਮੇਸ਼ਰ ਦੇ ਭਗਤਾਂ ਨੂੰ ਇਹ ਸੋਤੇ ਪ੍ਰਾਪਤ ਹੁੰਦੀਆਂ ਹਨ ਰਿੱਧਿ ਸਾਧ ਜਦ ਗੁਰੂ ਸਾਹਿਬ ਆਖਦੇ ਹਨ ਤਾਂ ਮੁਰਾਦ ਇਹ ਹੈ ਕਿ yogi ਲੋਕ ਤਰਾਟਕ ਮੁਦਰਾ ਅਤੇ ਜੋਗ ਕਰਿਆ ਰਹੀ ਇਹਨਾਂ ਰਿੱਧੀਆਂ ਸਿਧੀਆਂ ਨੂੰ ਪਾ ਲੈਣਾ ਹੀ ਜੀਵਨ ਲਕਸ਼ ਸਮਝਦੇ ਸੀ ਆਸਣ ਸਿਧ ਸਿੱਖੇ ਬਹੁ ਮਨ ਮੰਗੇ ਰਿੱਦ ਸਿਦ ਚਿਟਕ ਚਿਟਕਈਆ ਤ੍ਰਿਪਤ ਸੰਦੋਖ ਮਨ ਸ਼ਾਂਤ ਨਾ ਆਵੇ ਮਿਲ ਸਾਧੂ ਤ੍ਰਿਪਤ ਹਰ ਨਾਮ ਸਿਦ ਪਈਆ ਨਾਲ ਹੀ ਜਦੋਂ ਇਹ ਅਲੋਕਿਕ ਸ਼ਕਤੀਆਂ ਪ੍ਰਾਪਤ ਹੁੰਦੀਆਂ ਹਨ ਤਾਂ ਆਪਣੀ ਪ੍ਰਪਤਾ ਵਾਸਤੇ ਲੋਕਾਂ ਨੂੰ ਇਨਾ ਰਾਹੀਂ ਡਰਾ ਕੇ ਜਾਂ ਕਿਸੇ ਦਾ ਕਾਰਜ ਸਵਾਰ ਕੇ ਆਪਣੀ ਪ੍ਰਸਿੱਧੀ ਕਰਾਉਣਾ ਉਹਨਾਂ ਦਾ प्रयोजन ਸੀ ਜਦ ਪ੍ਰਪਤਾ ਆ ਜਾਂਦੀ ਸੀ ਤਾਂ ਬਿਰਤੀ ਹੰਕਾਰੀ ਹੋ ਜਾਂਦੀ ਸੀ ਨਾਲ ਹੀ ਕ੍ਰੋਧ ਵਾਸ ਹੋ ਕੇ ਦਾ ਦੁਰਪਯੋਗ ਕਰਦੇ ਸਨ ਇੰਨਾਂ ਗੱਲਾਂ ਵਿੱਚ ਹੀ ਜ਼ਿੰਦਗੀ ਖਰਾਬ ਕਰ ਲੈਂਦੇ ਸੀ ਇਸ ਲਈ ਮਹਾਰਾਜ ਨੇ ਕਿਹਾ ਰਤ ਅਵਰਾ ਸਾਧ ਇਸ ਦੀ ਪ੍ਰੂਰਤਤਾ ਲਈ ਬੰਦੇ ਬਹਾਦਰ ਦਾ ਪ੍ਰਮਾਣ ਮੌਜੂਦ ਹੈ ਕਿਸ ਤਰ੍ਹਾਂ ਆਪਣੇ ਡੇਰੇ ਵਿੱਚ ਆਏ ਬੰਦੇ ਨੂੰ ਪਲੰਘ ਤੇ ਬਿਠਾ ਕੇ ਪਲੰਘ ਉਲਟਾ ਕੇ ਖੜਖੜਾ ਕੇ ਹੱਸਦਾ ਸੀ ਦਸ਼ਮੀਸ਼ ਜੀ ਨੇ ਵੀ ਇੰਜ ਹੀ ਕੀਤਾ ਪਰ ਦਸ਼ਮੀਸ਼ ਜੀ ਨਾਲ ਵੀ ਇੰਜ ਹੀ ਕੀਤਾ ਪਰ ਜਦ ਗੁਰੂ ਸਾਹਿਬ ਨੇ ਅੱਗੇ ਬੰਦੇ ਦੀ ਕਰਾਮਾਤ ਨਾ ਚੱਲੀ ਤਾਂ ਚਰਣੀ ਪੈ ਗਿਆ ਜਿਸ ਤਰ੍ਹਾਂ ਸਿਆਣਾ ਡਾਕਟਰ ਮਰੀਜ਼ ਦੀ ਮਰਜ਼ ਦੇਖ ਕੇ ਪੀਣ ਦੀ ਦਵਾਈ ਇੰਜੈਕਸ਼ਨ ਜਾਂ ਆਪਰੇਸ਼ਨ ਜੋ ਠੀਕ ਹੋਵੇ ਉਹ ਕਰਦਾ ਹੈ ਇਸੇ ਤਰ੍ਹਾਂ ਗੁਰੂ ਸਾਹਿਬ ਨੇ ਮਾਨਸਿਕ ਬਿਮਾਰੀ ਵਾਲੇ ਲੋਕਾਂ ਲਈ ਜੋ ਉਹਨਾਂ ਨੂੰ ਠੀਕ ਲੱਗਿਆ ਉਹੀ ਕੀਤਾ ਮੰਤਵ ਲੋਕ ਕਲਿਆਣ ਦਾ ਸੀ ਪਰ ਸਿੱਧਾਂ ਦਾ प्रयोजन ਇਸ ਦੇ ਉਲਟ ਸੀ ਇਸੇ ਲਈ ਸਿੱਧਾਂ ਵਰਗੇ ਨਾਟਕ ਚੇਟਕਾਂ ਨੂੰ ਭੰਡਿਆ ਹੈ ਸਤਿਗੁਰੂ ਰੋਗ ਆਸਾਦ ਨਿਵਾਰੇ ਅਨੁਸਾਰ ਗੁਰੁ ਸਾਹਿਬ ਨੇ ਲੋਕਾਈ ਦਾ ਭਲਾ ਕਰਨ ਲਈ ਜਦ ਦੇਖਿਆ ਕਿ ਬੰਦਾ ਅਗਿਆਨੀ ਹੈ ਤਾਂ ਗੁਰਬਾਣੀ ਦਾ ਗਿਆਨ ਬਖਸ਼ੇ ਸਿੱਧੇ ਰਾ ਪਾ ਦਿੱਤਾ ਜਿੱਥੇ ਦੇਖਿਆ ਕਿ ਸ਼ੁਭ ਵਿਚਾਰਨ ਦੀ ਕਾਟ ਹੈ ਉਹ ਪੂਰੀ ਕੀਤੀ ਜਿੱਥੇ ਦੇਖਿਆ ਕਿ ਕੋਈ ਪਦਾਰਥਕ ਲੋੜ ਕਰਨ ਨਾਲ ਬੰਦਾ ਪ੍ਰਭੂ ਪ੍ਰੇਮੀ ਬਣ ਜਾਵੇ ਤਾਂ ਸਹਾਇਤਾ ਕਰ ਦਿੱਤੀ ਜਿੱਥੇ ਦੇਖਿਆ ਕਿ ਹੰਕਾਰੀ ਬਿਰਤੀ ਦਾੜੀ ਵਾਲਾ ਬੰਦਾ ਹੈ ਵਿਚਾਰ ਕੰਮ ਨਹੀਂ ਆਉਣਗੇ ਤਾਂ ਪੰਜਾ ਸਾਹਿਬ ਵਾਲੀ ਕਲਾ ਵਰਤਾ ਦਿੱਤੀ ਛੋਰਾ ਡਾਕੂ ਕੋਲ ਵੀ ਹੈ ਤੇ ਡਾਕਟਰ ਕੋਲ ਵੀ ਤਾਕੂ ਚੁਰਾ ਲੋਕਾਂ ਨੂੰ ਲੁੱਟਣ ਤੇ ਟੋਟਣ ਲਈ ਦੁਖਦਾਇਕ ਹੈ ਪਰ ਡਾਕਟਰ ਦਾ ਜੱਕੂ ਆਪਰੇਸ਼ਨ ਕਰਕੇ ਕਿਸੇ ਵੀ ਜਾਨ ਬਚਾਉਣ ਲਈ ਹੈ ਲੋਹੇ ਦੀ ਤਲਵਾਰ ਤੇ ਲੋਹੇ ਚੱਲੀ ਅਤੇ ਦਸ਼ਮੀਸ਼ ਜੀ ਦੀ ਤਲਵਾਰ ਜ਼ੁਲਮ ਰੋਕਣ ਲਈ ਚੱਲੀ ਇਸੇ ਤਰ੍ਹਾਂ ਲੋਕ ਭਲਾਈ ਲਈ ਵਰਤੀ ਆਤਮ ਸ਼ਕਤੀ ਕਰਾਮਾਤ ਠੀਕ ਹੈ ਪਰ ਆਪਣੀ ਸ਼ੋਭਾ ਵਧਾਉਣ ਲਈ ਜਾਂ ਲੋਕਾਂ ਨੂੰ ਡਰਾ ਕੇ ਮਾਇਆ ਇਕੱਠੀ ਕਰਨ ਲਈ ਕਰਾਮਾਤ ਤੇਗ ਸਿੱਧੀ ਤੇ ਕਰਾਮਾਤ ਹੈ ਭਗਤ ਨਾਮਦੇਵ ਜੀ ਅਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਵੇਲੇ ਹਾਕਮ ਵੱਲੋਂ ਰੱਖੀ ਗਈ ਸ਼ਰਤ ਕਿ ਕਰਾਮਾਤ ਦਿਖਾਓ ਤਾਂ ਇਹ ਛੜ ਦਿੱਤਾ ਜਾਵੇਗਾ ਇਸੇ ਤਰ੍ਹਾਂ ਵੀ ਨਹੀਂ ਕਿਹਾ ਜਾ ਸਕਦਾ ਬਲਕਿ ਆਪਣੀ ਜਾਨ ਬਚਾਉਣ ਲਈ ਰਾਜੇ ਦੀ ਗੱਲ ਮੰਨਣੀ ਹਿੰਮਤਾ ਵਾਲੀ ਸੀ ਸਾਹਮਣੇ ਆਈ ਮੌਤ ਤੋਂ ਡਰ ਕਰਨ ਵਾਲਾ ਕਾਰਾ ਕਿਹਾ ਜਾਣਾ ਸੀ ਇਸ ਲਈ ਗੁਰੂ ਸਾਹਿਬ ਜੀ ਨੇ ਰਾਜਾ ਵਿੱਚ ਰਹਿ ਕੇ ਸੀਸ ਪੇਟ ਕਰਕੇ ਬਾਹਰੀ ਅਹੰਕਾਰ ਨੂੰ ਤੋੜ ਕੇ ਅਸਲੀ ਜਿੱਤ ਹਾਸਲ ਕੀਤੀ ਜੋ ਸਦਾ ਅਮਰ ਰਹੇਗੀ ਪਰ ਘੱਗਾ ਤੇ ਇਹਦੇ ਸਮਰਥਕ ਵਿਦਵ ਸੋਚ ਦੇ ਮਾਲਕ ਇਹਨਾਂ ਡੂੰਘੀਆਂ ਰਾਮਜਾਂ ਤੋਂ ਅਣਭੇਜ ਇਹਨਾਂ ਸ਼ਕਤੀਆਂ ਨੂੰ ਹੀ ਮੰਨਣ ਨੂੰ ਤਿਆਰ ਨਹੀਂ ਕਿਉਂਕਿ ਵਿਗਿਆਨ ਇਹਨਾਂ ਨੂੰ ਨਹੀਂ ਮੰਨਦਾ ਅਤੇ ਸ਼ਬਦ ਜਾਲ ਰਾਹੀਂ ਸਿੱਖ ਇਤਿਹਾਸ ਤੇ ਗੁਰੂ ਇਤਿਹਾਸ ਨਾਲ ਖਲਵਾੜ ਕਰ ਰਹੇ ਹਨ ਇੰਦਰ ਸਿੰਘ ਘੱਗਾ ਅਤੇ ਇਸ ਦੀ ਵਿਚਾਰਧਾਰਾ ਦੇ ਮਿਸ਼ਨਰੀ ਕਾਲਜ ਦੇ ਸਾਥੀ ਗੁਰੂ ਘਰ ਵਿੱਚ ਅਲੌਕਿਕ ਆਤਮਿਕ ਸ਼ਕਤੀ ਤੋਂ ਮੁਨਕਰ ਹੰਜਦ ਕੇ ਇਹ ਆਪ ਇਸ ਕਿਤਾਬ ਦੇ ਆਰੰਭ ਵਿੱਚ ਮੰਨਦੇ ਹਨ ਕਿ ਬਾਬਾ ਟੱਲ ਜੀ ਤੇ ਬਾਬਾ ਗੁਰਦਾਤਾ ਜੀ ਗੁਰੂ ਪਿਤਾ ਦਾ ਹੁਕਮ ਮੰਨ ਕੇ ਸਰੀਰ ਛੱਡ ਗਏ ਕੀ ਇਹ ਕਰਾਮਾਤ ਆਤਮ ਸ਼ਕਤੀ ਨਹੀਂ ਸੀ ਕਿ ਇੰਦਰ ਸਿੰਘ ਘਗਾ ਤੇ ਇਸ ਦੇ ਵਿਚਾਰਤਾ ਇਸ ਤਰ੍ਹਾਂ ਕਰਕੇ ਦਿਖਾ ਸਕਦੇ ਹਨ ਜਾਂ ਕੋਈ ਵਿਗਿਆਨੀ ਇਸ ਤਰ੍ਹਾਂ ਕਰ ਸਕਦਾ ਹੈ ਗੁਰੂ ਬਾਬੇ ਦੀ ਮੱਕੇ ਦੀ ਫੇਰੀ ਬਾਰੇ ਪਈ ਗੁਰਦਾਸ ਜੀ ਲਿਖਦੇ ਹਨ ਟੰਗੋ ਪਕੜ ਕੇ ਫਿਰਿਆ ਮੱਕਾ ਕਲਾ ਦਿਖਾਰੀ ਹੋਏ ਹੈਰਾਨ ਕਰੇਨ ਜੋਹਾਰੀ ਸਪਸ਼ਟ ਅਰਥਾਂ ਕਿ ਗੁਰੂ ਸਾਹਿਬ ਜੀ ਨੂੰ ਲੱਤ ਤੋਂ ਫੜ ਕੇ ਖਿੱਚਿਆ ਗਿਆ ਪੈਰਾਂ ਦੇ ਘੁੰਮਣ ਦੇ ਨਾਲ ਮੱਕਾ ਘੁੰਮ ਗਿਆ ਅਤੇ ਹੈਰਾਨ ਹੋ ਕੇ ਸਭ ਨੇ ਗੁਰੂ ਸਾਹਿਬ ਨੂੰ ਨਮਸਕਾਰ ਜਾਂ ਸਜਦਾ ਕੀਤਾ ਪਰ ਵਿਗਿਆਨਕ ਇਹ ਅਰਥ ਪ੍ਰਮਾਣ ਨਹੀਂ ਸੀ ਇਸ ਲਈ ਕਹਿੰਦੇ ਹਨ ਕਿ ਬਾਬੇ ਨੇ ਕਿਹਾ ਕਿ ਭਾਈ ਜਿੱਧਰ ਰੱਬ ਨਹੀਂ ਉਧਰ ਪੈਰ ਕਰਦੇ ਵੋ ਉਹਨਾਂ ਨੂੰ ਪੇਧਪਰੀ ਗੱਲ ਸਮਝ ਆ ਗਈ ਅਸੀਂ ਆਖਦੇ ਹਾਂ ਕਿ ਅੱਜ ਦਾ ਕੋਈ ਵੀ ਤਰਕਸ਼ੀਲ ਮੈਦਾਨ ਵਿੱਚ ਆ ਜਾਵੇ ਅਤੇ ਬਾਬੇ ਵਾਂਕਾਬੇ ਵਾਲ ਪੈਰ ਕਰਕੇ ਸੌ ਜਾਵੇ ਟਿਕਟ ਦਾ ਖਰਚਾ ਅਸੀਂ ਦੇਵਾਂਗੇ ਜੀਵਨ ਬੀਮਾ ਉਹ ਆਪਣਾ ਕਰਵਾ ਲਵੇ ਦੇਖੇ ਹੱਡੀਆਂ ਦੀ ਅਸੀਂ ਦੇਵਾਂਗੇ ਸਭ ਤੋਂ ਪਹਿਲਾਂ ਨੂੰ ਕਹਾਂਗੇ ਹਿੰਮਤ ਕਰੇ ਤੇ ਗਿਨੀਜ਼ ਬੁੱਕ ਵਿੱਚ ਆਪਣਾ ਨਾਮ ਦਰਜ ਕਰਵਾ ਲਵੇ ਜਦ ਦਾਸ ਦੇ ਟੈਲੀਫੋਨ ਤੇ ਕੱਗਾ ਜੀ ਨੂੰ ਇਸ ਬਾਰੇ ਪੁੱਛਿਆ ਤਾਂ ਉਹ ਕਹਿਣ ਲੱਗੇ ਤੁਸੀਂ ਮੈਨੂੰ ਮਰਵਾਉਣਾ ਚਾਹੁੰਦੇ ਹੋ ਜਦ ਕਿ ਉਹ ਇਸ ਲੇਖ ਦੇ ਆਰੰਭ ਵਿੱਚ ਜੀਵਤ ਜੀਵਤ ਦੀ ਵਿਆਖਿਆ ਕਰ ਰਹੇ ਹਨ ਸੋ ਜਿਵਿਆ ਜਿਸਮਨ ਵਸਿਆ ਸੋਏ ਫਿਰ ਇਹ ਮਰਨ ਤੋਂ ਡਰਦੇ ਕਿਉ ਹਨ ਪੰਜੋਖਰਾ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਇੱਕ ਗੁੰਗੇ ਚੀਵਰ ਦੇ ਸਿਰ ਤੇ ਆਪਣੀ ਖੁੰਡੀ ਰੱਖ ਕੇ ਗੀਤਾ ਦਾ ਅਰਥ ਕਰਵਾ ਦਿੱਤੇ ਪ੍ਰੋਫੈਸਰ ਸਹਿਬ ਸਿੰਘ ਜੀ ਨੇ ਇਸ ਤੱਥ ਨੂੰ ਜੀਵਨ ਵਰਤਾਂ ਸੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਵਿੱਚ ਕਬੂਲਿਆ ਹੈ ਇਸ ਤਰ੍ਹਾਂ ਬ੍ਰਾਹਮਣਾਂ ਦੇ ਸਿਖਾਏ ਇੱਕ ਕੋੜ ਦਾ ਮਰੀਜ਼ ਗੁਰੂ ਰਣ ਸਾਹਿਬ ਦੀ ਪਾਲਕੀ ਅੱਗੇ ਲੇਟ ਗਿਆ ਤਾਂ ਗੁਰੂ ਸਾਹਿਬ ਜੀ ਨੇ ਆਪਣੀ ਜੀਭ ਵਿੱਚੋਂ ਰੁਮਾਲ ਦੇ ਕੇ ਉਸ ਨੂੰ ਆਪਣੇ ਸੀਰ ਤੇ ਫੇਰਨ ਲਈ ਕਿਹਾ ਅਤੇ ਨਾਮ ਜਪਣ ਦਾ ਉਪਦੇਸ਼ ਦਿੱਤਾ ਜਿਸ ਨਾਲ ਉਹ ਠੀਕ ਹੋ ਗਿਆ ਇਸ ਕੀਕਤ ਨੂੰ ਪ੍ਰੋਫੈਸਰ ਸਾਬ ਸਿੰਘ ਜੀ ਅਤੇ ਮਿਸ਼ਨਰੀ ਕਾਜੁਰ ਰਿਆਣੇ ਵਾਲੇ ਮੰਨਦੇ ਹਨ ਪਰਿੰਦਰ ਸਿੰਘ ਘੱਗਾ ਨੇ ਸ਼ਬਦ ਜਾਲ ਵਿਸਾ ਕੇ ਇਹ ਪਹਿਲੀ ਘਟਨਾ ਨੂੰ ਨਾਟਕੀ ਢੰਗ ਨਾਲ ਤਰੋੜ ਮਰੋੜ ਕੇ ਇਸ ਕਿਤਾਬ ਤੇ ਪੇਸ਼ ਕੀਤਾ ਹੈ ਦੁਨੀਆ ਦੇ ਸਾਰੇ ਧਰਮ ਜਿਹੀਆਂ ਲੋਕਿਕ ਸ਼ਕਤੀਆਂ ਨੂੰ ਮੰਨਦੇ ਹਨ ਕੇਵਲ ਕਾਮਰੇਡੀ ਸਿੱਖ ਚੁੰਚ ਗਿਆਨ ਦੁਆਰਾ ਗੁਰਬਾਣੀ ਦੇ ਅਰਥਾਂ ਦੇ ਅਨਰਥ ਕਰ ਰਹੇ ਹਨ ਅਤੇ ਗੁਰ ਇਤਿਹਾਸ ਜਾਂ ਸਿੱਖ ਇਤਿਹਾਸ ਨਾਲ ਖਿਲਵਾੜ ਕਰ ਰਹੇ ਹਨ ਦੁਨੀਆ ਮੰਨ ਜਾਏਗੀ ਪਰ ਇਹ ਕਦੇ ਨਹੀਂ ਮੰਨਣਗੇ ਸ਼ਬਦ ਦੇ ਅਰਥ ਕਰਨ ਵੇਲੇ ਇੰਦਰ ਸਿੰਘ ਕੱਗਾ ਤੇ ਇਸ ਦੇ ਸਾਥੀ ਲਿਖਕ ਨੇ ਜੋ ਕਾਮਰੇਡੀ ਰੰਗ ਭਰਿਆ ਨਾਮਦੇਵ ਦੇ ਸਾਥੀ ਵੀ ਘੱਟ ਕੇ ਆ ਗਏ ਬਾਸ਼ਟ ਲਾ ਪੈ ਗਏ ਇਤਿਆਦ ਤੋਂ ਹੈ ਤੋ ਪਤਾ ਚਲਦਾ ਹੈ ਕਿ ਲੇਖਕਾ ਨੂੰ ਉਸ ਸਮੇਂ ਦੀ ਰਾਜਨੀਤਿਕ ਤੇ ਸਮਾਜਿਕ ਮਾਨਸਿਕਤਾ ਬਾਰੇ ਕੁਝ ਵੀ ਪਤਾ ਨਹੀਂ ਹੈ ਬੁੱਧ ਧਰਮ ਤੇ ਇਸ ਜੈਨ ਧਰਮ ਦੀ ਹਿੰਸਾ ਪਰਮੋ ਧਰਮਾ ਦੇ ਸੂਰ ਅਨੁਸਾਰ ਜਨਤਾ ਨੇ ਸ਼ਸਤਰਾਂ ਦਾ ਤਿਆਗ ਕਰ ਦਿੱਤਾ ਸੀ ਤੇ ਵਿਦੇਸ਼ੀ ਹਮਲਾਵਰਾਂ ਨੇ ਬਾਰ ਬਾਰ ਦੇ ਹਮਲਿਆਂ ਤਸਾਂ ਜ਼ੁਲਮਾਂ ਦੇਸ਼ ਵਾਸੀਆਂ ਨੂੰ ਹੀਣ ਭਾਵ ਵਾਲੇ ਅਤੇ ਕੈਰ ਬਣਾ ਦਿੱਤਾ ਸੀ ਹਾਲਾਤ ਇਹ ਸੀ ਕਿ ਤੁਗਲਕਾਂ ਦੇ ਰਾਜ ਤੋਂ ਬਹੁਤ ਪਹਿਲਾਂ ਮੁਹੰਮਦ ਬਿਨ ਕਾਸਮ ਕੇਵਲ 500 ਕੋੜਸਵਾਰਾਂ ਨਾਲ ਪੰਜਾਬ ਦੇ ਸਿੰਧ ਦੇ ਖੇਤਰ ਵਿੱਚ ਕਾਬਜ਼ ਹੋ ਗਿਆ ਸੀ। ਇੰਦਰ ਸਿੰਘ ਘੱਗਾ ਇੱਕ ਵੀ ਮਿਸਾਲ ਇਤਿਹਾਸਿਕ ਹਵਾਲੇ ਨਾਲ ਪੇਸ਼ ਨਹੀਂ ਕਰ ਸਕਦਾ ਜਿੱਥੇ ਭਗਤ ਨਾਮਦੇਵ ਜੀ ਨੇ ਬਹਾਦਰ ਸਮਾਜੀਆਂ ਨੇ ਕੋਈ ਜਨਤਕ ਅੰਦੋਲਨ ਕੀਤਾ ਹੋਵੇ। ਮੁਹੰਮਦ ਤੁਗਲਕ ਦੇ ਬਾਬਾ ਗਿਆਸੁਦੀਨ ਤੁਗਲ ਅਤੇ ਪਿਤਾ ਫਰੂਸ਼ਾ ਤੁਗਲਕ ਜੋ ਜ਼ੁਲਮ ਦੇਸ਼ ਵਾਸੀਆਂ ਤੇ ਧਾਇ ਜੇ ਕਿਸੇ ਪਾਠ ਕਿਸ ਦਾ ਇਤਿਹਾਸ ਪੜ ਲੈਣ تحقیق نظر ਆ جاوے گی مغلاں ویلے اے حال سی کہ کوئی اک مغل یا پٹھان کورٹ دے چڑھ کے پنڈ دے باہر جا کھڑدا سارے پنڈ ہاں سارے پنڈ دے ہاتھ جوڑ کے اس اگے آ کھڑ جاندے سن تے او پٹھان ایسا پیسہ ٹکا اورت جو مرضی لے جاندا کوئی کوئی چورک نہیں کر سکدا سی صاحب کمال گرو گوپین سنگھ دے کرتا دولت رائے نے اپنی کتاب وچ اے تاریخی تَتھ دے کے کتاب دے پنا 25 تو لے ਦੇਸ਼ ਦੇ ਸ਼ਸਤਰਧਾਰੀ ਖੱਤਰੀਆਂ ਦੀ ਅਖਾਨ ਧਰਮ ਹਮਾਰਾ ਤੋਲਣ ਤਕੜੀ ਨੰਗੀ ਕਰਦ ਕਬੂਨੇ ਪਕੜੀ ਇਸ ਦੀ ਪ੍ਰੋੜਤਾ ਲਈ ਕਾਫੀ ਹੈ ਜੇ ਕਿਸੇ Hindu ਨੇ ਹਾਕਮ ਕੋਲ ਅਰਜ ਕਰਨੀ ਹੁੰਦੀ ਤਾਂ ਗਲ ਵਿੱਚ ਪੱਲੂ ਪਾ ਕੇ ਮੂੰਹ ਵਿੱਚ ਘਾ ਲੈ ਕੇ ਹੱਥ ਜੋੜ ਕੇ ਖੜਦਾ ਸੀ ਇਸ ਦੇ ਵਪਰੀਦ ਘੱਗਾ ਤੇ ਉਸ ਦੇ ਸਾਥੀ ਲੇਖਕ ਭਗਤ ਨਾਮਦੇਵ ਜੀ ਅਤੇ ਉਹਨਾਂ ਦੇ ਖੌਤੀ ਹਿਮਾਇਤੀਆਂ ਨੂੰ ਉਸ ਸਮੇਂ ਦੀ ਹਕੂਮਤ ਦਾ ਟੱਕਰ ਲੈਣ ਵਾਲਾ ਬਹਾਦਰ ਦਰਸਾਰੇ ਹਨ ਨਿਰਾ ਕੁਫਰ ਇਸ ਤੋਂ ਅੱਗੇ ਲੇਖ ਦੇ ਅਖੀਰ ਵਿੱਚ ਜੋ ਕੁਝ ਲਿਖਿਆ ਹੈ ਕਿ ਕਿਤ ਉਲਟ ਹੈ 1984 ਅਤੇ ਇਸ ਤੋਂ ਪਿੱਛੇ ਤਕਰੀਬਨ 12 ਸਾਲ ਇੰਦਰ ਸਿੰਘ ਘੱਗਾ ਅਨੁਸਾਰ ਬ੍ਰਾਹਮਣਵਾਦੀ ਦੰਮਲੀ ਟਕਸਾਲ ਤੇ ਸਿੰਘ ਦੇ ਖੰਡਕਿਤਨੀ ਜਥੇ ਜੋ ਕੁਰਬਾਨੀ ਕੀਤੀ ਅਤੇ ਕਸ਼ ਸਹੇ ਉਹ ਮੌਜੂਦਾ ਸਿੱਕ ਤੇ ਆ ਦੀ ਸ਼ਾਨਦਰਜਾ ਕੀ ਪੇਸ਼ ਕਰਦਾ ਹੈ ਜਦ ਇੰਦਰ ਸਿੰਘ ਘੱਗਾ ਤੇ ਮਿਸ਼ਰੀ ਕਾਲਜਾਂ ਦੇ ਪੈਰੋਕਾਰ ਤਕਰੀਬਨ ਕਈ ਲੱਖ ਤੋਂ ਉੱਪਰ ਗਿਣਤੀ ਦੇ ਬਾਅਦ ਕੁਝ ਵੀ ਐਸਾ ਨਹੀਂ ਕਰ ਸਕੇ ਜੋ ਇਤਿਹਾਸ ਵਿੱਚ ਲਿਖਣ ਹੋਵੇ ਜਿਸ ਤਰ੍ਹਾਂ ਜੱਬਲਪੁਰ ਆਰਐਸ ਦਾ ਥਿੰਕ ਟੈਂਕ ਬਣਾਇਆ ਹੋਇਆ ਹੈ ਜਿਸ ਵਿੱਚ ਤਕਰੀਬਨ 30-32 ਸੇਵਾਮੁਕਤ ਆਈਏ ਸਦਕਾਰੀ ਦੱਸੇ ਜਾਂਦੇ ਹਨ ਗੁਰਬਾਣੀ ਤੇ ਸਿੱਖ ਇਤਿਹਾਸ ਨੂੰ ਪੜ੍ਹ ਕੇ ਆਪਣੀ ਮਰਜ਼ੀ ਅਨਸਾਰ ਸਹੀ ਤੱਥਾਂ ਨੂੰ ਤਰੋੜ ਮਰੋੜ ਕੇ ਦੁਨੀਆ ਨੂੰ ਗੁੰਮਰਾਹ ਕਰ ਰਹੇ ਹਨ ਇਸੇ ਤਰ੍ਹਾਂ ਮਲੂਮ ਹੁੰਦਾ ਹੈ ਕਿ ਕਾਮਰੇੜਾ ਦਾ ਵੀ ਬਹੁਤ ਵਿਦਵਾਨ ਤੇ ਘਾਕ ਬੰਦੇ ਦਾ ਟੋਲਾ ਹੈ ਗੁਰਬਾਣੀ ਤੇ ਸਿੱਖ ਇਤਿਹਾਸ ਨੂੰ ਕਾਮਰੇਡੀ ਰੰਗਣ ਵਿੱਚ ਰੰਗ ਕੇ ਪੇਸ਼ ਕਰ ਰਿਹਾ ਜਿਸ ਤਰ੍ਹਾਂ ਕਿ ਮਿੰਦਰ ਸਿੰਘ ਚੋਸ ਦੀਆਂ ਕਿਤਾਬਾਂ ਤੋਂ ਸਿੱਧ ਹੁੰਦਾ ਕਿ ਵਰਨਾ ਡਾਕਟਰ ਨੋਕ ਸਿੰਘ ਜੀ ਦੇ ਕਥਨ ਅਨੁਸਾਰ 8ਵੀਂ ਪਾਸ ਡਰਾਈਵਰ ਤੋਂ ਡਿਸਮਿਸ ਹੋਇਆ ਇੰਦਰ ਸਿੰਘ ਅੱਗੇ ਵੱਲੋਂ ਕੀਤੀ ਜਹੀ ਪੇਸ਼ਕਾਰੀ ਸ਼ੱਕ ਦੇ ਦਰੇ ਵਿੱਚ ਆ ਸਕਦੀ ਹੈ ਕਿ ਜਦਕਿ ਇਸ ਦੇ ਭਾਈ ਵੱਲ ਸਪਾਈ ਨੌਕਰੀ ਤੋਂ ਡਿਸਮਿਸ ਹੋਏ ਸੰਤਾਂ ਦੇ ਕੌਤਕ ਦੇ ਕਰਤਾ ਸੁਖਵਿੰਦਰ ਸਵਰਾ ਦੀ ਸ਼ਬਦਾਵਲੀ ਬਿਲਕੁਲ ਇਸ ਤੋਂ ਵੱਖਰੀ ਹੈ ਜਦਕਿ ਵਿਪਰਨ ਕੀ ਰੀਤੋ ਸਾਜ ਮਾਰਗ ਦੀਆਂ ਪੁਸਤਕਾਂ ਬਾਰੇ ਅਸੀਂ ਸਾਬਤ ਕਰ ਦਿੰਦਾ ਹੈ ਕਿ ਇਹਨਾਂ ਦਾ ਲੇਖਕ ਕਾਲਾ ਨਹੀਂ ਕਾਲਾ ਫਗਾਨਾ ਨਹੀਂ ਕੋਈ ਹੋਰ ਹੈ